ਕਬੂਤਰਾ ਆਇਆ ਜਿੱਥੇ ਤਾਂ ਤਾਂ ਨੂੰ ਤਾਂ ਨੂੰ ਕੋਟਾਂ ਨੂੰ ਸੁਆਇਆ ਜਿਹੜਾ ਪ੍ਰਭਾ ਵਾਲਾ ਪਰ ਜਰੀਰ ਹੈ ਸਿਆ ਬਾਹਰ ਦੇ ਸੁਪਤੀ ਹੈ ਮਾਇਆ ਇਸ ਦੀ ਮਾਇਆ ਤਾਂ ਤੁਨ ਆਉਂ ਆਇਆ ਤੇ ਆ ਗਿਆ ਜੋ ਦੂਜੇ ਤੋਂ ਆਇਆ ਇਹ ਜੋ ਵੀ ਇਹ ਸੰਸਾਰ ਹੈ ਜਿੰਨਾ ਉਹ ਆਪਣਾ ਹੈ ਸੈਸਾ ਤਾਂ ਸਾਰਾ ਹੀ ਮਾਕੂੜ ਪਰ ਰਾਜਾ ਕੂੜ ਸਭ ਸੰਸਾਰ ਹੈ ਤਾਂ ਵਿਚੇ ਆ ਗਿਆ ਆਪਣਾ ਤਾਂ ਤੇ ਤੁਨ ਵਿਚੇ ਆ ਗਿਆ ਇਹ ਸਾਰਾ ਸੰਸਾਰ ਇਹ ਕੂੜ ਹੈ ਵਿਥਿਆ ਤਾਂ ਆਪਣਾ ਵਾਲਾ ਵੀ ਵਿਚੇ ਉਹ ਇਹਦੇ ਕਹਿੰਦਾ ਬਤੇ ਆਤਮਾ ਹਨ ਉਹ ਕੰਮ ਕੋ ਡੱਬੂ ਵੀ ਸਰੀਰ ਹੈ ਉਹ ਹੀ ਹੋ ਗਿਆ ਆਤਮਾ ਦਾ ਨਾ ਆਪਣੀ ਜੀਵਨ ਆਪਣਾ ਸੁਣਨ ਦੀ ਗੱਲ ਹੈ ਦੁਨੀਆ ਦੇ ਵਿੱਚ ਕੋਈ ਆਤਮਾ ਦੀ ਗੱਲ ਨਹੀਂ ਜਿਹੜਾ ਜਿਆਦਾ ਆਤਮਾ ਦੀ ਗੱਲ ਇੱਥੇ ਕਰ ਲਿਆ ਆਤਮਾ ਦੀ ਗੱਲ ਆਦੋਂ ਹੀ ਪੜਾਈ ਚ ਬਾਲ ਦੀ ਗੱਲ ਸਾਰੀ ਹੋ ਫੈਸਲ ਜਿੱਥੇ ਕਿਵੇਂ ਜਿਵੇਂ ਇੱਕ ਬੋਲਦਾ ਹੈ ਸਰੀਰ ਸਰੀਰ ਵਿੱਚ ਜਿਹੜਾ ਬੋਲਦਾ ਹੈ ਜਦੋਂ ਕਹਿੰਦਾ ਮੈਂ ਉਹ ਆਪਣੇ ਆਪ ਨੂੰ ਮੈਂ ਕਹਿੰਦਾ ਨਾਲੇ ਸਰੀਰ ਨੂੰ ਕਹਿੰਦੇ ਜਦੋਂ ਕਹਿੰਦਾ ਪੇ ਵੇਰਾਜ ਵੀ ਸਰੀਰ ਨਹੀਂ ਦੇ ਮੈਂ ਤਾਂ ਅਡਾ ਸਰੀਰ ਅਡਾ ਉਹ ਸਰੀਰ ਨਹੀਂ ਮੇਰੇ ਹੋਂਦ ਕੋਲ ਨਹੀਂ ਕੰਮ ਕਰਦੇ ਜਦੋਂ ਸਰੀਰ ਹੋ ਰਿਹਾ ਤਾਂ ਕੋਈ ਹੋ ਰਿਹਾ ਅਜਿਹਾ ਵਿਹਾਰ ਕਰਦਾ ਗੋਡੇ ਨਹੀਂ ਚੱਲਦੇ ਗੋਡੇ ਹੀ ਚੱਲਦੇ ਫਿਰ ਇਹ ਨਹੀਂ ਹੁਣਾ ਸਾਹ ਦਿੰਦਾ ਤੁਸੀਂ ਜਵਾਬ ਦੇਈਏ ਫਿਰ ਜਵਾਬ ਨਹੀਂ ਜਾਂਦਾ ਫਿਰ ਸੁਮੀਰ ਰੱਟੇ ਗਿਆ ਫਿਰ ਅਬਰ ਫਾਇਰ ਨਹੀਂ ਇਹ ਨਾ ਤਾਂ ਨੇ ਇਹ ਬਤੇ ਬਤੇ ਕੋਈ ਜੇ ਸੱਚ ਹੁੰਦਾ ਹੈ ਵੀ ਤਾਂ ਤਾਂ ਬੁढ़ा ਹੋਣੀ ਨਹੀਂ ਪੁਰਾਣਾ ਹੋਣੀ ਨਹੀਂ ਪਰ ਆਣਾ ਹੋਇਆ ਸੱਚ ਜਿਹੜੇ ਦਾ ਜੋੜ ਹੈ ਉਹ ਦੰਡ ਜੋੜ ਹੈ ਸੱਚ ਪਰਣਾ ਹੁਦਾ ਨਹੀਂ ਇਹ ਪਰਾਣਾ ਹੋ ਗਿਆ શરીਤਾਂ ਜੋੜੇ ਸੀ ਇਹ ਝੋੜਦਾ ਬਣਿਆ ਹੈ ਮਾਇਆ ਦਾ ਬਣਿਆ ਫੁੱਲ ਪਾਇਆ શરીਜਾ ਆਪਣਾ ਮਾਇਆ ਦਾ ਸਾਰੇ ਕੁਟੰਮ ਦਾ ਵੀ ਪਾਇਆ ਉਹ ਵੀ ਦੇ ਹੋ ਗਿਆ ਇਸ ਕਰਕੇ ਮਾਇਆ ਦੇ ਵਿੱਚ ਜੋ ਵੀ ਜੀ ਜਾ ਤਾਨੇ ਚਾਹ ਤੰਦ ਚਾਹ ਕੁਟੰਮ ਹੈ ਇਸ ਤਰ੍ਹਾਂ ਕੋਈ ਡਾਇਰਕਟ ਧਾਨ ਅਸੀ ਦਮਾਂ ਦੇ ਅਤ ਗਿਆਨ ਤਾਂ ਤੇ ਨਾਲ ਸੰਬੰਧ ਸਿਰ ਨਾ ਵੀ ਧਾਨ ਗਿਆਨ ਦੇ ਭਾਇ ਲੋ ਸਾਰੇ ਚੀਜ ਉਹ ajo ਸਾਥੀ ਹਰ ਇੱਕ ਆਬਦੀ ਉਹ ਲਾ ਲਿਓ ਬਿਤੇ ਗਿਆਨ ਦੇ ਵਿੱਚ ਆਏ ਕਿਸੇ ਪਰਵਾਹ ਸਾਰੀ ਗਿਆਨ ਵਿੱਚ ਹੀ ਆ ਗਿਆ ਫਿਰ ਹੋ ਜਾਓ ਇਹ ਮੈਂ ਫਰਜੀ ਕਰ ਨਹੀਂ ਉਹ ਡਾਕਟਰਾਂ ਗਿਆ ਮੈਂ ਇਹ ਲੱਗਿਆ ਸੀ ਹੈ ਮਤਲਬ ਉਹ ਅੱਜ ਜਿਹੜੀ ਅਸੀਂ ਗੱਲ ਕਹਿੰਦੇ ਹਾਂ ਕੱਲੋਂ ਅਸੀਂ ਆਪ ਕੋਲ ਵਿੱਚ ਕਾਫੀ ਕੁਝ ਤਬਦੀਲੀ ਆ ਜਿਵੇਂ ਜਿਹੜੀ ਬਿਮਾਰੀ ਅੱਜ ਦੇਹੀ ਹੈ ਕੱਲੋਂ ਉਹ ਪਹਿਲਾਂ ਵੀ ਹੋ ਜਾਂਦੀ ਹੈ ਇਹ ਜਿਹੜੀ ਸਾਡੇ ਕੋਲ ਜਿਹੜੀ ਫਲਸਫੀ ਹੈ ਜੇ ਜਿਵੇਂ ਐਜਿਟ ਕੋਈ ਬਵਾ ਦੇ ਜਿਹੜੀ ਦਮੀ ਪੈਦਾ ਹੋਣੀ ਹੈ। ਕੋਈ ਆਗਣਾ ਨਹੀਂ ਜਿਹੜਾ ਨਵਾਂ ਪੈਦਾ ਹੋਣ। ਸਾਰੇ ਆਪ ਘਣਾਉਣ ਨਹੀਂ ਦੇ। ਉਹ ਨਹੀਂ ਰਹੇ ਨੇ। ਬਹੁਤ ਲੋਕ ਘੜੇ ਦੇ। ਉਹ ਜਿੱਦੇ ਸਾਡੇ ਨਾਲ ਲੋਡ ਪੈਦੀਆ ਅਜਾ ਦੇ ਸਭ ਚੀਜ਼ ਉਹਨੇ ਕਦੇ ਨਾ ਹੁੰਗੜੇ। ਹੁਣ ਕਿੰਨੀ ਬੈਠੀਆਂ ਨੇ ਸਰੀਰ ਦੇ ਭਗਵਾਨੇ ਇੱਕ ਅਲੱਗ-ਅਲੱਗ ਪੈਠੀ ਦੋ ਰਾਜ ਹੁੰਦੇ ਨੇ ਅਲੱਗ-ਅਲੱਗ ਕਰਦੇ ਨੇ ਉਹ ਵੀ ਬੈਠੇ ਵਾਲੇ ਵੀ ਰਾਜ ਕਰਦੇ ਨੇ ਇਹ ਵਾਲੇ ਵੀ ਰਾਜ ਕਰਦੇ ਨੇ ਆਰ ਮੈਦ ਵੀ ਰਾਜ ਕਰਦੇ ਨੇ ਪਰ ਇਹ ਕੋ ਹੋਰ ਵਿੱਚ ਬੈਠੀਆਂ ਨੇ ਸ਼ਹਿਰੀ ਉਹ ਵੀ ਆਧੁਨਿਕੀ ਵੀ ਆ ਗਈ ਵੀ ਆ ਗਈ ਥੈਰੇਪੀ ਵੀ ਆ ਗਈ ਇਹ ਕਿਹ ਅਦਾ ਦੇ ਬਿਮਾਰੀ ਹੋਈ ਆ ਇਹ ਮੱਤਾ ਅਦਾ ਦੇ ਬਿਮਾਰੀਆਂ ਹੋਈ ਨੇ ਬਾਯਾ ਦੇ ਵਿੱਚ ਜਿਵੇਂ ਅਸੀਂ ਇਲਾਜ ਕਰਦੇ ਸੀ ਦੇ ਦੀਆਂ ਬਿਮਾਰੀਆਂ ਦਾ ਇੱਕੋ ਬਿਮਾਰੀ ਦਾ ਕਈ ਤਰੀਕੇ ਨਾਲ ਆਉਣਾ ਲੋਕਾਂ ਨੇ ਕਈ ਤਰੀਕਿਆਂ ਨਾਲ ਇਲਾਜ ਕੀਤਾ ਬੋਟੀਆਂ-ਬੋਟੀਆਂ ਬਿਮਾਰੀਆਂ ਜਿਹੜੀਆਂ ਬੋਟੀਆਂ ਬੋਲਦੇ ਜਦੋਂ ਲੋਬ ਦਾ ਜਾ ਕਰਨਾ ਬਹੁਤ ਆਹ ਕਰਨਾ ਕੁਝ ਨਹੀਂ ਉਹ ਕਾਰਜਾ ਕਿਆ ਕਰਨਾ ਨਬਰਦਾਰਤਾ ਹਰ ਨਕਾਰੀ ਸੇਵਾ ਕਰਦੀ ਉਹ ਉਤੇ ਸੌਤੇ ਹੋ ਆਪਣੇ ਪਰਸਨਸਾਰ ਪੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉੱਪਰਾਂ ਦਾ ਵੀ ਨਹੀਂ ਸੀ ਪਤਾ ਪੰਜ ਬੰਦੇ ਸੀ ਸੈ ਸੀ 6 ਜੇ ਬੱਤੇ ਸਰਦਾਰ ਉਹ ਕਰਨ ਨਾ ਦੇਖੋ ਇਹ ਆ ਹੋੜਾ ਤਾਂ ਆਇਗਾ ਜਿੱਤਾ ਤਸਬੂਤ ਸਾ ਲੱਗਦੀ ਤੇ ਉਹੜਾ ਮਾਰੇ ਉਹ ਜਿਹੜੇ ਅਸੀਂ ਪੰਜ ਲੈਣੇ ਨੇ ਉਹ ਤਾਂ ਬਿਲਕੁਲ ਬਹੁਤ ਭੂੜ ਨੇ ਅੰਝੇ ਉਹ ਤੇ ਪੰਜ ਸਰੇ ਨੇ ਜਿਵੇਂ 1000 ਤੋਂ ਪੰਜ ਕਾਲੇ ਫੋਟੇ ਥੋੜੀ ਉੱਤੇ ਜਾ ਕੇ ਛਾੜਦੇ ਭੂੜ ਉਹਦਾ ਉਹ ਤਾਂ ਸਿਰੇ ਬਰਾਬਰ ਹੁੰਦਾ ਜਲੰਧਾ ਜਿੱਥੇ ਕੱਠਾ ਦਾ ਭੂੜ ਹੈ ਇਹ ਤਾਂ ਜੜਾ ਚਲੇ ਗਿਆ ਜੀ ਜਦ ਕਿ ਨਾ ਕੁੱਤੇ ਨੂੰ ਉਹਦਾ ਨਾ ਉਹ ਮੂੜ ਆ ਜਾਂਦਾ ਜੜਦਾ ਰੋਤੇ ਦਾ ਸੈਟ ਹੋੜ ਅਪੋਜ਼ਿਟ ਨਾ ਮੂੜਾ ਇਧਰਾਂ ਦਾ ਮੂੜ ਪੱਟੀ ਕੇ ਜੇ ਤੋ ਵੱਢਨੀ ਹੈ ਉਹਨੋਂ ਫੇਰ ਫਟਿਆ ਹੋਈ ਹੈ ਜੀ ਇਹ ਮੇਰੇ ਮੂੜ ਹੁੰਦਾ ਇਹ ਸਰੀਰ ਪੱਟੇ ਦਾ ਮੂੜ ਫੇਰ ਫਟਿਆ ਹੁੰਦਾ ਮੂੜ ਦੇ ਵਿੱਚ ਆਪਕਾ ਗਾਇਰੂ ਉਹਦੇ ਆਤਮ ਹੁਜਰ ਪਰ ਆਪ ਕੋ ਸਨ ਹਾ ਮੁਝੇ ਦੱਸੋ ਹਾਂ ਕਈ ਤਰੀਕੇ ਦੇ ਲੇਕਿਨ ਜੇ ਨਾਲ ਉਹਨੂੰ ਛੇ ਤੋਂ ਨਾ ਇਹ ਨਹੀਂ ਸਮਝਾਈਏ ਜੇ ਮੈਂ ਜਾਊਗਾ ਨਾ ਇਹ ਨਹੀਂ ਉਹਨਾਂ ਨੂੰ ਪੂਰੀ ਨਹੀਂ ਸੀ ਸਮਝਦੇ ਉਹਨਾਂ ਦੀ ਗੰਟੀ ਹੋ ਸਮਝੇ ਲੋਕਾਂ ਨੂੰ ਦੋਵੇਂ ਕੁੱਝ ਦੱਸਣ ਤੋਂ ਪੂਰਾ ਲੈ ਆਪੀ ਸੋ ਮੈਂ ਅੱਜ ਗੁਰਬਾਣੀ ਨੂੰ ਪੂਰਾ ਗਾਇਨਾ ਪੂਰੇ ਉਗੜ ਕੋਈ ਐਸਾ ਉੱਗੜ ਜਿਹੜਾ ਨਵਾਂ ਪੈਦਾ ਕਰੋ ਜੋ ਹੋ ਰਹੇ ਹਨ ਹਵਾ ਤੇ ਵਿੱਚ ਆ ਗਈ ਜਿਹੜੇ ਪੰਜ ਰੇਿਆਂ ਤੋਂ ਪੈਦਾ ਹੁੰਦੇ ਨੇ ਆਖਰ ਇੱਕਾਇਲਾ ਥੱਥ ਇੱਕ ਦੇ ਕੋਲ ਥੱਲੇ ਰੂਸਰੀ ਪੈ ਜਾਂਦੀ ਹੈ ਸਾਡੇ ਸਿੱਧੀ ਸਿੱਧੀ ਉਹ ਥੱਲੇ ਨੂੰ ਸਿੱਧੀ ਜਾਂਦੀ ਹੈ ਇੱਕ ਦਰਾਖਤ ਦੇ ਵਿੱਚ ਜੋ ਵੀ ਕਿਸੇ ਦਾ ਉੱਤੇ ਨੂੰ ਜਾਂਦਾ ਗੇਲੀ ਇਹਨੂੰ ਬੜੋ। ਉਹਦੇ ਉੱਤੇ ਸਿੱਧੀ ਵੀ ਜਾਂਦੀ ਹੈ ਸਾਡੀ ਸਰੇੜੂ। ਬਾਕੀ ਅੰਦਰੋਂ ਡਾਲਾਂ ਏਵੇਂ ਜੜਾਣੇ। ਇਹ ਕਿਸੇਤੀ ਥੱਲੇ ਨੂੰ ਦਾ ਥੱਲੇ ਜਲਾ ਨਾ ਜਿੱਦਲੇ ਪਾਸਾ ਤਾਂ ਜਦ ਸੁਪਰੀ ਜਾਂਦੀ ਹੈ ਥੱਲੇ ਕੱਟੀ ਜਾਂਦੀ ਹੈ ਜਿਹਦੇ ਉਸੇ ਪਾਸੇ ਪੰਜ ਵੀ ਮੇਲ ਦੇ ਨੇ ਇਹਨਾਂ ਨੇ ਗਿਛੇ ਪੰਜ ਗਿਨੇ ਪੰਜ ਰੋਗ ਦਾ ਸਾਥ ਜਾਮੇ ਹਾਂ ਬੇ ਦੇ ਪਾਸੇ ਦਾ ਅਗਾੜੇ ਜਿਹੜਾ ਪ੍ਰਦਾਨ ਹੈ ਅਗਾੜੇ ਪਾਸੇ ਦਾ ਹਰ ਅਗੇ ਤਾਂ ਕਈ ਰੂਪ ਨੇ ਅੱਗੇ ਪ੍ਰਕਾਰ ਦੀ ਹੈ ਜਠਰਾ ਦੱਬੇ ਚਾਰ ਪ੍ਰਕਾਰ ਦੀ ਹੈ ਹਕਮ ਦੀ ਹੋ ਜਾਂਨੇ ਹਾਲੇ ਤੋ ਜਿਆਦਾ ਪ੍ਰਕਾਰ ਦੀ ਗੋ ਹੋ ਸਕਦਾ ਹੈਂਗੇ ਪਰ ਚਲੋ ਚਾਰ ਪ੍ਰਕਾਰ ਹਾਂ ਮੈਨ ਨੇ ਹੰਸੇਤ ਲੋਭ ਕੋ ਵਿਚਾਰੇ ਨੇ ਦੀ ਅੱਜ ਇਸ ਕਰਕੇ ਲੋਭ ਹੈ ਇੱਕ ਪਾਸੇ ਦਾ ਉਹ ਹੈ ਉਹਦੇ ਲੋਭ ਦੇ ਬਹੁਤ ਟੁਕੜੇ ਬਣਦੇ ਦਸਣ ਲੱਗੇ ਇਸ ਤਰੀਕੇ ਨਾਲ ਰੰਗ ਤੇਰੇ ਨੇ ਜਦ ਨਾਲ ਬਾਰੇ ਜੋ ਇਹ ਕੰਪਿਊਟੇਸ਼ਨ ਪਰ ਕੰਪਿਊਟੇਸ਼ਨ ਨਾਲ ਲੱਖਾਂ ਰੱਖ ਬੜੇ ਪਏ ਸੰਸਾਰ ਵਿੱਚ ਲੇਕਰ ਸੇਕਰ ਨੂੰ ਉਹਨਾਂ ਦੀ ਕੁਆਂਟੀਟੀ ਪਰ ਕੰਪਿਊਟੇਸ਼ਨ ਉਹਦੇ ਨਾਲ ਰੋਮ ਰੋਮ ਨਾਲ ਬਣਦੀ ਜੇ ਦੀ ਕੁਆਟੀ ਬਿਤਾਦੀ ਤੇ ਦੀ ਬੜੀ ਹੈ ਕਿ ਸ੍ਰੀ ਕਹਿੰਦਾ ਇਹਨਾਂ ਉਗਲਾਂ ਦੀ ਕੁਆਟੀਟੀ ਹੈ ਕਿ ਸਭ ਜ਼ਿਆਦਾ ਕਿੰਨਾ ਜ਼ਿਆਦਾ ਇਹਦੇ ਨਾਲ ਕੰਪਿਊਟੇਸ਼ਨ ਦਾ ਸਾਡੇ ਸੁਭਾਅ ਬਣਦਾ ਸਵਾਲ ਅਲੱਗ-ਅਲੱਗ ਤਰੀਕਿਆਂ ਨਾਲ ਸਾਰਿਆਂ ਦੀ ਇਹ ਗੋਰਾ ਫਿਰ ਨਹੀਂ ਬਣਦਾ ਇਹੋ ਕਹਿੰਨੇ ਨੇ ਇੱਕ ਵਾਰ ਜਿਹੜਾ ਰੰਗ ਬਣਾਤਾ ਉਹਦੇ ਵਰਗਾ ਨਹੀਂ ਬਣਦਾ ਕਹਿੰਨੇ ਜੇ ਕੋਸ਼ਿਸ਼ ਵੀ ਕਰੀਓਗਾ ਜਿਹਦਾ ਕਬੂਲ ਨਹੀਂ ਬਣਦਾ ਤੇਵੇਂ ਸੁਭਾਅ ਇੱਕ ਦੂਜੇ ਵਰਗਾ ਬਣਦਾ ਹੀ ਨਹੀਂ ਇਹ ਬਣਾਵੇ ਕੰਮ ਨਹੀਂ ਬਣਦਾ ਕਿੱਥੇ ਅੱਗੇ ਬਣਦਾ ਜਿੱਥੇ ਬਣਦਾ ਉੱਥੇ ਸੁਭਾਅ ਫਿਰ ਰਹਿਦਾ ਜੀ ਉਦੈ ਮਰਜੰਦਾ ਜਿੱਥੇ ਸਭਾ ਇੱਕ ਬੰਦਾ ਉੱਥੇ ਤੇ ਮਰਜਾ ਦੇਖੋਗੇ ਦੁਬਾਈ ਮਰਦਾ ਜਿਹੜਾ ਦੂਰੇ ਸ਼ਰੀਕ ਬੰਦਾ ਉਹੀ ਮਰਦਾ ਜਿੱਥੇ ਦਾ ਸ਼ਰੀਕ ਹੈ ਖੁਦਾ ਹੈ ਉਦੈ ਤਾਂ ਕੇ ਮੌਤ ਹੈ ਸ਼ਰੀਕ ਖੁਦਾ ਅਗਰ ਸ਼ਰੀਕ ਖੁਦਾ ਆ ਭਾਵ ਨਹੀਂ ਵਰਦੀ ਹੈ ਸ਼ਰੀਕ ਖੁਦਾ ਲਈ ਇਹ ਆਕੜ ਹੈ ਨਾ ਅਹੰਕਾਰ ਇਹ ਕੇ ਬਰਾਹਮਣ ਉਹ ਮਰਦੀ ਇਹ ਬੰਦੇ ਆ ਕਹਦਾ ਓਏ ਬੰਦਿਆ ਮਨਾਉ ਕਲੰਕ ਮਰ ਜਾਂਦਾ ਹੈ ਕੁੰਦਨ ਕਲੰਕ ਤੇ ਉਹ ਹੈ ਉਹ ਜਿਹੜਾ ਰੰਗ ਵਰਦਾ ਨਾ ਕਲੰਕ ਵਾਲਾ ਕਾਲਸ ਵਰਦੀ ਹੈ ਉਹ ਨੂੰ ਵਸਾਂਉਂਦੇ ਹੋਇਆ ਜਾਦੇ ਗੱਲ ਦਾ ਪਤਾ ਲੱਗਿਆ ਫੇਰ ਕਹਿੰਦਾ ਉਹ ਇਹ ਮੁੰਡੇ ਦਾ ਚਾਹ ਉਹ ਕਲੰਕ ਤੋਂ ਐਂਕੋ ਚਾਹ ਉਹ ਸਤ ਸਤ ਬਰਤਲ ਹੁੜਾਏ ਕਲੰਕ ਲੈ ਉਹ ਕਲੰਕ ਲੈ ਕੇ ਦਰਦ ਨਹੀਂ ਬਹਤਾ ਹੁੰਦਾ ਅਸਰੀਰ ਮਾਇਆ ਦਾ ਵੀ ਕਲੰਕ ਲੈ ਜਾਣਾ ਜਦ ਤੱਕ ਉਹ ਸਰਫੜੇ ਪਾਣੀ ਚ ਪਾਇਆ ਹੋਇਆ ਸਾਰੇ ਪਾਣੀ ਦੇ ਤਾਂ ਪਾਇਆ ਸਾਬਣ ਧੋਏ ਤਾਂ ਰਹੇ ਆ ਕਿ ਕਰਮ ਤਾਂ ਹੈਗਾ ਜਦੋਂ ਕੰਪੂਟਰ ਕੇ ਫੇਸ ਕਿਉਂ ਤਾਂ ਸਰ ਵਿੱਚ ਕੋਈ ਪਾਊਗਾ ਕਿਉਂ ਮੁਸਾਬੜਾ ਹੋਊਗਾ ਕਿਉਂ ਤਾਂ ਕਿਉਂ ਉਹਦੇ ਡੰਡਾ ਬਜੂਗਾ ਕਿਉਂ ਐਸੇ ਵੀ ਰਹੂਗਾ ਬਸੀ ਲੋਟਾਈ ਇਹ ਐ ਕਹ ਲੀਆ ਯਾਰ ਜੀ ਜੇ ਤੱਕ ਜਾਂਦਾ ਰਹੇ ਜੇ ਨਹੀਂ ਸਮਝੇ ਦੇਖ ਲੈਂਦਾ ਐ ਪਰ ਪਰਖਾ ਤੋਂ ਉਹ ਲੈਂਦੇ ਪਾ ਲੈ ਪਸੇ ਹੋ ਜਾਂਦਾ ਉਹ ਕਹਿੰਦਾ ਵੀ ਮਰਮਾਨੇ ਦਾ ਚਾਹ ਉਹ ਦੁਆ ਬੋਨ ਨਾਲ ਕੈਸਾ ਸਰੋਣੀ ਹਾਂ ਜਦੋਂ ਸਟ ਪਹਿਨ ਲੈਂਦਾ ਦੇਖ ਲੈਂਦਾ ਪਰਖ ਲੈ ਦੇ ਪਰਖੇ ਤੇ ਨਾ ਫਿਰ ਵੜੀ ਚੁੱਕਾ ਗੱਲ ਤਾਂ ਪਰਸ਼ ਤੇ ਆਵੇ ਸੁਣ ਲਈਏ ਜੇ ਮਾਮੋਬੇ ਮੋਝੋ ਕਈ ਵਾਰ ਬੈਠਦਾ ਨਾ ਫਿਰ ਵੰਦ ਫਿਰ ਦੋਸਤ ਹੋਜੀ ਕਹਿੰਦੇ ਨੇ ਕਹਿੰਦਾ ਪਹਿਲਾਂ ਕਹਿੰਦਾ ਰਹੇ ਜਾਉਂਦਾ ਜਸ ਆਪਣੇ ਇੱਕ ਦੋ ਨਾਲ ਮੁੰਡੇ ਮਰ ਜਾਂਦਾ ਰੋਜ਼ ਗੋਲੀ ਚਾਦੀਦਾ ਨਾ ਤੋ ਸਹੀ ਤਰ੍ਹਾਂ ਦੱਸ ਉਹ ਜਿਹੜੇ ਸ਼ਾਂਤ ਗੜੀ ਸੰਗਤ ਗੜੀ ਨੇ ਉਹਨਾਂ ਨੂੰ ਦਵਾਈ ਨਹੀਂ ਕੋਣ ਮਾਰ ਗਿਆ ਹੋਇਆ ਇੱਕ ਦਿਨ ਦੋ ਦਿਨ ਚਾਰ ਦਿਨ ਸੁਣ ਕੇ ਹਿੰਸਾ ਲਗਾਤਾਰ ਸੰਗਤ ਦੇ ਵਿੱਚ ਜੇਕਰ ਪੂਰਾ ਸਮਝ ਕੇ ਸਾਰੀ ਗੱਲ ਨੂੰ ਭਾਵੇਂ ਗਿਆਨ ਹੈ ਬਦਤਦਾਰ ਗੱਲ ਹੈ ਇਹ ਜਦੋਂ ਸਾਰੇ ਮਸਲੇ ਆ ਗਏ ਮਸਲਾ ਹੋ ਜਾਂਦਾ ਹੈ ਉਦੋਂ ਉਹ ਮੰਦਰ ਵੀ ਹੌਸਲੇ ਗਲਤੀ ਯਕੀਨ ਕਰਦੇ ਸਭ ਕੁਝ ਦੇਖ ਲਈ ਅਜੇ ਉਹ ਕੋਦੋਂ ਤੇ ਦੇਖਿਆ ਜਾਂ ਕੀ ਹੋਵੇ ਚੋਕ ਪਰੇ ਸਿਰੋ ਥੋੜਾ ਸ਼ਰਮ ਉਡੀਕ ਵੇਟੇ ਦੀ ਘਟਨਾ ਤਾਂ ਹੋ ਗਿਆ ਕੋਈ ਨਹੀਂ ਸੋਚਦਾ ਅਜਿਹੀ ਜਿਹੀ ਹੋ ਹੋ ਗਿਆ ਕਦਾ ਬੜਾ ਨਗੇ ਤਾਂ ਅਛ ਲੜਾਦੇ ਬਸ ਉਹਨਾਂ ਚ ਆਦਮੀ ਆਏ ਨੇ ਉਹ ਤਾਂ ਗੱਲ ਹੀ ਨਹੀਂ ਦੇ ਮਾਦਾਰੀ ਸਭ ਉਹ ਹੀ ਕਰਨ ਦਾ ਥੋੜੀ ਗੱਲ ਬਸਾਉਣੀ ਹੈ ਉਹਨਾਂ ਨੂੰ ਪਤਾ ਵੀ ਨਾ ਸਾਨੂੰ ਮਿਲਿਆ ਨਾ ਸਾਥੇ ਹੋ ਗਈ ਇਹ ਦੁਸਤਾਨ ਦੇ ਜਰਾਜ ਬਸ ਦੇ ਇਮਾਨਦਾਰ ਕਹਿਣਾ ਉਹ ਵੀ ਬਦਰਾਮ ਹੋ ਜਾਣਗੇ ਇੰਨੇ ਬੰਦੇ ਕੌਣ ਲੈ ਕੇ ਉਹ ਬਜਨ ਸਾਹਿਬ ਲੈ ਕੇ ਆਉਂਦੇ ਉਹਨਾਂ ਦੇ ਵੀ ਸਿਫੇ ਦੇ ਜਾਂਦੇ ਰੋਇ ਹੈ ਨਾ ਬੰਦੇ ਉਹ ਹੀ ਕੋਟੇ ਸਿਕਈ ਨੇ ਬਿਜਾਹ ਤੇ ਮਿਲਣਾ ਜਦੋਂ ਕੋਈ ਪਰਖਦਾ ਦੇਖਦਾ ਵੀ ਹਾਂ ਇਹ ਗੱਲ ਠੀਕ ਹੈ ਕਿ ਦਾਦਾ ਦਾ ਠੀਕ ਹੁਦਰਾ ਚੱਲਿਆ ਜਾਂਦਾ ਹੈ ਆਪਾਂ ਇਹ ਭਰ ਲੈਣ ਉਹਨੇ جاد ਠੀਕ ਹੋਵੇ ਗੱਲੇ ਜਦੋਂ ਫਿਰ ਤਾਂ ਇਹੋ ਠੀਕ ਹੈ ਇਹ ਕੁਦਰਤ ਉਹਦਿਸਾ ਸਾਰਾ ਦਿਨ گزرਦਾ ਹੀ ਹੈ ਕੋਈ ਸੁਣੀਆਂ ਗੱਲਾਂ ਵੀ ਸੁਣਦੇ ਹੋ ਲੋਕਾਂ ਦੇ ਸੁਣੀਆਂ ਜਾਂਦਾ ਕੋਈ ਜਦੋਂ ਪਰਤਾਕ ਤੇ ਦੇਹੜਣਾ ਲਿ ਜਾਂਦਾ ਹਾਂ ਕੁਦਰਤ ਦੇ ਵਿੱਚ ਫੇਰ ਗੱਲ ਕੁਦਰਤ ਦਿਖਾਣ ਲੱਗਿਆ ਵੀ ਇਹ ਆ ਰਿਹਾ ਹੈ ਬੇੜਾ ਪਾਣੀ ਪਿੱਛੇ ਇਸਨੂੰ ਵੀ ਲੈ ਰਹਾ ਹਾਂ ਕਹਿੰਦੇ ਇਹਨੂੰ ਕੱਢ ਲੋ ਤਾਂ ਪਿੱਛੇ ਗੰਗਾ ਜਿਹਾ ਪਾਣੀ ਆਉਣਾ ਤਿੰਨ ਦਿਨ ਪਹਿਲਾਂ ਪਤਾ ਲੱਗ ਜਾਂਦਾ ਔਰੇ ਵਾਲਿਆਂ ਨੂੰ ਜੇ ਸਤਲੁਜ ਜੀ ਵੀ ਪਾਣੀ ਆਉਣਾ ਹੋਵੇ ਪਿੱਛੇ ਪਹਿਲਾਂ ਇਹਦਾ ਉਹਨਾਂ ਕਹਿੰਦੇ ਭਾਈ ਬਾਹਰ ਆਜੋ ਪਿੱਛੇ ਪਾਣੀ ਹੋਵੇ ਇਸ ਕਰਕੇ ਕੁਦਰਤ ਦਾ ਗਰੋਪੀ ਦਾ ਇਹ ਉਹਦਾ ਪਤਾ ਲੱਗ ਜਾਂਦਾ ਪਹਿਲਾਂ ਇੱਥੇ ਸਾਡੇ ਕੋਲ ਸਾਹ ਜੰਦੇ ਆਪ ਪਤਾ ਲੱਗ ਜਾਂਦਾ ਪਹਿਲਾਂ ਕਿੱਥੇ ਪਤਾ ਲੱਗਦਾ ਆ ਜੀ ਦੇ ਲੱਗਣਾ ਹੋ ਸਕਦਾ ਨੇ ਅੰਦਰ ਜੀ ਹੋਰ ਸੇ ਸਮਾਨ ਦਾ ਥੋੜਾ ਬਿਲਕੁਲ ਠੀਕ ਠੀਕ ਪਤਾ ਲੱਗਦਾ ਜਾਂਦਾ ਜਿਵੇਂ ਉਹ ਬਹੁਤ ਦੇ ਸਾਡੇ ਕੋਤੇ ਕੋਈ ਮੋਬਾਈਲ ਹੈਗਾ ਤੇ ਜਦੇ ਖਬਰ ਆ ਜਾਂਦੀ ਹੈ ਹਾਂ ਮਿੱਥਿਆ ਤਨ ਤਨ ਸਵਾਇਆ ਮਿੱਥਿਆ ਹੋਮੇ ਮਮਤਾ ਵਾਇਆ ਮਿੱਥਿਆ ਹੋਪੇ ਬਹੁਤ ਸਭ ਤਕੋ ਖੁਦ ਬਬਤਾ ਬਾਇਆ ਕਟਾਉਂ ਤੇ ਸਬਾਇਆ ਹਤਾਨ ਔਰ ਤਾਨੇ ਇਹ ਹੀ ਕਾਰਨ ਦੇ ਸਾਧੂ ਇੱਦਕ ਗਿਸੋਉਂਦੇ ਜੜ ਮੰਨਦੇ ਕਾਲੀ ਇਹਦੇ ਇਹ ਸਬਦ ਸੱਚ ਝੂਠ ਨਹੀਂ ਹੈ ਜਿਹੜਾ ਬੋਲਦਾ ਉਹਦਾ ਨਹੀਂ ਹੈ ਕੋਈ ਬਾਪ ਜਿਹੜਾ ਉਹਦਾ ਬਾਪ ਹੋ ਉਹਦਾ ਪਤਾ ਨਹੀਂ ਜਿਹੜਾ ਆਪ ਸੁਸਤਾਨ ਨੇ ਬਨਿਆ ਹੋਇਆ ਤੇ ਬੁੱਧਿਆ ਹੋਇਆ ਬਨਿਆ ਹੋਇਆ ਆਪ ਹੈ ਬੇਸ ਗੱਲ ਹੈ ਆਤਮਾ ਆਤਮਾ ਨੂੰ ਸ਼ਰੀਰ ਦੀ ਬਣਦਾ ਆਤਮਾ ਜਲੀ ਗਈ ਸ਼ਰੀਰ ਹੋਰ ਬਣ ਜੂਆ ਸ਼ਰੀਰ ਨੂੰ ਆਤਮਾ ਨਹੀਂ ਮਿਲਣੀ ਜਿਹੜਾ ਹੋਣਾ ਹੈ ਸ਼ਰੀਰ ਦੇ ਸੰਦੂਵਾਰ ਆਤਮਾ ਮਿਲੀ ਹੋਵੇ ਸਾਬਸ ਕਰੋ ਆਤਮਾ ਨੂੰ ਸ਼ਰੀਰ ਬਣ ਗਿਆ ਜਿਹਨੂੰ ਕੁਰਬਾਨੀ ਵੀ ਬਣਦੀ ਹੈ ਲੋਕ ਸਾਰੇ ਬੋਲਦੇ ਨੇ ਸ਼ਰੀਰ ਆਤਮਾ ਨਹੀਂ ਸ਼ਰੀਰ ਨੂੰ ਆਤਮਾ ਮਿਲਿਆ ਇਸ ਪ੍ਰੋਜੈਕਟ ਜੀ ਦਾ ਅਵਲ ਅਲੋ ਪਹਿਲੇ ਹੀ ਬਣਾ ਜੀ ਜੋ ਯਾਦ ਪੂਰੀ ਹੈ ਭਈ ਜੇ ਬੱਚਾ ਪੈਦਾ ਹੋ ਕੱਪੜੇ ਦੀ ਤਾਂ ਲੋੜ ਪਊ ਉਹਦੇ ਕੱਪੜਾ ਪਾਉਂਦੀ ਜਾਂ ਰੋਟੀ ਦੀ ਰੋਟੀ ਦੀ ਜਾਂ ਕੋਈ ਉਹਦੇ ਪਹਿਰਾ ਹੰਦਾ ਬਸਤਰ ਕੋਈ ਵੀ ਉਹਨੂੰ ਲੋੜ ਪਊ ਜੇ ਹੋਊ ਤਾਂ ਬਾਚ ਲੋੜ ਪਊ ਆਦਮੋ ਵੀ ਸੇਰੂ ਬਗਾ ਜਦrangle ਆਤਮਾ ਦਵਾਰਾ ਸੇਰੂ ਆਤਮਾ ਨਹੀਂ ਪੜੀਓ ਕਿ ਤੇ ਬੱਚਾ ਬਣ ਜੇ। ਇਹ ਬਾਰੇ ਵੀ ਚੱਲਵੇ ਕੋਈ ਨੀ ਇਹਨੂੰ ਸਰੀਰ ਤਾਂ ਠੀਕ ਆ। ਬਸ ਆ ਪੜਿਆ ਇਹਨੂੰ ਅਜਾਤ ਹੋਰ ਬੱਜੀ। ਹੋਇਆ ਕਦੇ ਨਹੀਂ ਤਾਂ। ਜੁੜੀ ਹੋਇਆ। ਸੇਰੂ ਆਤਮਾ ਨਹੀਂ। ਸੇਰੂ ਆਤਮਾ ਦੀ ਬਣਦੀ। ਬਸ ਵਿੱਚ ਹੀ ਹੈ ਬਹੁਤ ਕੁਝ। ਐ ਨੁਕਤੇ ਜਿਹਾ ਬਹੁਤ ਫਿਰ ਗਿਆ ਤੂੰ ਬਹ ਫੇਰਾ ਹੁਈ ਗਿਆ ਆਤਮਾ ਦਾ ਆਪਨੇ ਪਾਈ ਦਿੱਤਾ ਉਹ ਜਿਆ ਬਣੀ ਯਾ ਤਾਂ ਆਪਣੀ ਆਤਮਾ ਨੇ ਕੋਈ ਸਾਬ ਆਇਆ ਹੋਵੇ ਰਿਹਾ ਆਧੋਰ ਤੋਂ ਆਤਮਾ ਫੈਰਦੀ ਹੁੰਦੀ ਜੇ ਆ ਜੇ ਕੋਈ ਆਧ ਆਪਣਾ ਬੱਚਾ ਪੈਦਾ ਕਰ ਸਕਦਾ ਹੁੰਦਾ ਤਾਂ ਕੋਈ ਬੇਹਾਲ ਹੁੰਦਾ ਹੀ ਨਹੀਂ ਵੇਲਾਦੋ ਚੋਂ ਤੇ ਲੋਕ ਆਪਣੀ ਇੱਛਾ ਦੇ ਜਿਦੀ ਬੱਝੇ ਲੱਗਦਾ ਹੈ ਜਿਹੜਾ ਪਿਤਾਪੁਰਖੀ ਕਹਿੰਦੇ ਜੈਨੇਟਿਕ ਕਾਰਨ ਜਿਹੜਾ ਉਹ ਬੋਡੀ ਤੇ ਅਸਰ ਕਰਦਾ ਹੁੰਦਾ ਉਹ ਜੈਨੇਟਿਕ ਕਾਰਨ ਆਉਂਦੇ ਨੇ ਹੈ ਉਹਦਾ ਰੰਗ ਰੂਪ ਰੂਪ ਦਾ ਸਮਝਦਾ ਇਹਨਾਂ ਨੂੰ ਤੁਹਾਨੂੰ ਸਿੱਧੀ ਉਹ ਲੱਗਦਾ ਨਹੀਂ ਉਹ ਜਨਮੇ ਤਾਂ ਅੰਦਰ ਤੇ ਸੁਭਾਅ ਮਿਲਦਾ ਕੇ ਭੇਜਿਆ ਕੋਈ ਕਾਰਨ ਸੀ ਪਿੱਛੇ ਤਾਂ ਵੀ ਕੋਈ ਕਾਰਨ ਸੀ ਪਿੱਛੇ ਭੇਜਿਆ ਉਹ ਕਾਰਨ ਕੀ ਸੀ ਉਹ ਕੋਈ ਗੱਲਾਂ ਨੇ ਉਹਦੇ ਵੀ ਬਹੁਤ ਲੰਬਾ ਉਹ ਨੰਬਰ ਉਹਦਾ ਤੋਹਾ ਹੋ ਗਿਆ ਜਨਨ ਦੇ ਮੁੰਡੇ ਵਿਰੋਧੀ ਜਾਣ ਕੇ ਭੇਜੇ ਨੌਗਾ ਜਨਾ ਮੇਸਰ ਉਸ ਜਦੋਂ ਇਹ ਆਲਾ ਉਹ ਸੀ ਕਾਹਨ ਅੰਦਰ ਉਹ ਕਬਰੇ ਸਰਕਾ ਐਂਡੀ ਖਾਬਤ ਦੇ ਬਾਵਜੂਦ ਸਾਡ ਤੇ ਇਹ ਬਿਲਕੁਲ ਚੁੱਕਿਆ ਤੱਬੀ ਗੱਲ ਨਹੀਂ ਹੈ ਕਿ ਖਾਬਤ ਹੈ ਬਾਵਜੂਦ ਅੱਜ ਤੱਕ ਅਜੇ ਕੋਈ ਧੋਈ ਮੋਢੇ ਨਾ ਆਖਿਆ ਨਾ ਕਰੇ ਹੀ ਧੋਏ ਨਾਪੜੀ ਭੁਗਾ ਦੇ ਵੀ ਨਾ ਧੋਏ ਸਰਬੀ ਸਰਬੀਏ ਨਾਲ ਗਿਆ ਵੀ ਹੈ ਇਹਦਾ। ਹਾਂ। ਉਹਦੇ ਖੇਲੀ ਕੁੜੀਓਂ ਸਾਹੀ ਤਾਂ ਲੈ ਗਿਆ। ਫਰਵਾਰੀ ਯੂਪੀ ਸੀ ਦਾ। ਫਰਵਾਰੀ ਸੀ ਭਾਈ ਪੈਸਾ ਸੀ ਆਕੜ ਵੀ ਸੀ। ਫਰਵਾਰੀ ਦਾ ਉਹ ਹਕੂਮਤ ਕਰਦੇ ਆਏ। ਨਿਥਿਆ ਰਾਜ ਮਿੱਥਿਆ ਕਾਮ ਕ੍ਰੋਧ ਵਿਕਰਾਲ ਕਾਮਨਾ ਇੱਛਾ ਵਰ ਰੋਥ ਕਿਥੇ ਜਦੋਂ ਕੇ ਮਿੱਥਿਆ ਹੋਇਆ ਸਾਡਾ ਉਹ ਨਕਰਾ ਕਿ ਜੀਚੂ ਮਿੱਥਿਆ ਇਹ ਜੋ ਮਿੱਥਿਆ ਹੋ ਉਹ ਮਿੱਥਿਆ ਹੁੰਦਾ ਸਾਡੇ ਹੱਥ ਉਹ ਪੰਜਾਬੀ ਦਾ ਵੀ ਇਹ ਹਿੰਦੀ ਦਾ ਮਥੇ ਹਿੰਦੀ ਦਾ ਹੁੰਦਾ ਮਥਿਆ ਹੋਇਆ ਹੁੰਦਾ ਉਹ ਇੱਕ ਮਧਿਆਲਾ ਬਤਾਇਆ ਅਸੀਂ ਜੋ ਮੰਨ ਲੈ ਆ ਦਾ ਵੀ ਇਹਦਾ ਲਗਦਾ ਅਰਥ ਹੈ ਕਿ ਜਿਹਨੂੰ ਆਪਾਂ ਨਾਸਤ ਕਹਿੰਦੇ ਨਾਸਤ ਨਹੀਂ ਨਾਸਤ ਨਾਸਤ ਬਿਚਾਰਦਾ ਨਾਸਤ ਬੰਦਾ ਨਹੀਂ ਨਹੀਂ ਇਹ ਜੋ ਅੱਜ ਨੂੰ ਬਹਿਦਾ ਉਹ ਨਾਲ ਦੇ ਨਾਲ ਲਗਾਤਾਰ ਰੂਪੇ ਦਾ ਵਿਗੜਦਾ ਜਾ ਇਹਦਾ ਰੂਪ ਬਟਾਉਂਦੇ ਜੀ ਜੇ ਗੁਰਦਾ ਦੇ ਬਾਰੇ ਕਹਿੰਦੇ ਦੋ ਗੁਰਦਾਸ ਤੇ ਤੇ ਜਾਂ ਹੋਰ ਹੋ ਗਿਆ ਕਹਿੰਦੇ ਚਾਰ ਗੁਰਦਾਸ ਤੇ ਝੂਠ ਦੇ ਪੈਂਤਰੇ ਨੇ ਜਿਨਾਂ ਪਿੱਛੇ ਉੱਡਣਾ ਜਿਹੜੇ ਪਿੱਛੇ ਆਉਣਾ ਝੂਠਾ ਮਾਇਆ ਉਹ ਝੂਠ ਦਾ ਮੁੱਢ ਕੀ ਮਤਲਬ ਝੂਠ ਦਾ ਮੁੱਢ ਮੈਨੂੰ ਬਦਲ ਜਾਣਾ ਚੇਂਜ ਆਫ ਸਟੇਟ ਹੈ ਤੇ ਉਹ ਹੋ ਗਿਆ ਜੀ ਬਦਲ ਰਹੀ ਹੈ ਇਹ ਸਟੂਡੈਂਟ ਹੈ ਹੀ ਇਹ ਉਹ ਤਾਂ ਨਹੀਂ ਹੈ ਹੈ ਹੀ ਇਹ ਚੋੜੀ ਹੈ ਹੈ ਹੀ ਜਿਹੜੀ ਉੱਡੀ ਉੱਡੀ ਸੱਚ ਹੈ ਕੁਝ ਸੱਚ ਨਹੀਂ ਹੈ ਕੁਝ ਸੱਚ ਹੈ ਕੋਈ ਸੱਚ ਨਹੀਂ ਹੈ ਜਿਵੇਂ ਮਾਂ ਬਾਪ ਝੂਠ ਹੈ ਆਤਮਾ ਕਰਕੇ ਨਹੀਂ ਹੈ ਸਰੀਰ ਕਰਕੇ ਹੈ ਅੱਧਾ ਸੱਚਾ ਤਾਂ ਝੂਠ ਹੈ ਜੇ ਕੁਝ ਝੂਠ ਹੈ ਤਾਂ ਥੋੜਾ ਵੀ ਹੋਵੇ ਥੋੜਾ ਸੱਚ ਵੀ ਬੋਲਦਾ ਹੋਵੇ ਆਦਮੀ 70% ਆਦਮੀ ਸੱਚ ਬੋਲਦਾ ਹੈ 30% ਝੂਠਾ ਹੈ ਦਾ ਝੂਠ ਬੋਲਦਾ ਸੋਲਦਾ ਆਦਮੀ ਉਹ ਹੀ ਸਾਰੇ 60% ਦਾ ਝੂਠਾ ਹੈ ਬੋਲਦਾ 70% ਸੱਚ ਵੀ ਕੋਈ ਸੱਚ ਮੈਂ ਨਹੀਂ ਰੱਖਦਾ ਜੇ ਕੋਈ ਝੂਠ ਬੋਲਦਾ ਐਨਾ 25% ਝੂਠੇ ਆ ਗਏ ਨੂੰ 10% ਝੂਠ ਕੋ ਰਣਾ ਆਦਮੀ ਵੀ ਝੂਠਾ ਬਣੇ ਜਾਂਦਾ ਸੁਪੇਤ ਬੋਦਲੰਬੇ ਬਿਆਨ ਦੇ ਵਿੱਚ ਇੱਕ ਜਗ੍ਹਾ ਕੋਈ ਸ਼ਬਦ ਹੋ ਜਣ ਰਿਹਾ ਕਰਦਾ ਝੂਠ ਬੋਲਦਾ ਅਦਾਲਤ ਦਾ ਸਾਰਾ ਬੰਦ ਹੋ ਵਧੋ ਦੀ ਦਲੀਲ ਹੀ ਹੈ ਦੀ ਕਿ ਦੂਹੇ ਦਾ ਕੀ ਸਬੂਤ ਦਾ ਸੱਚ ਹੈ ਇਹ ਤੇ ਹਾਲਤਾਂ ਬੰਦੀ ਹੋਇਆ ਗਲ ਝੂਠ ਜਾਂਦਾ ਉਹ ਕਿਉਂ ਨਹੀਂ ਝੂਠਾ ਸੱਚਾ ਚਲੇ ਜਾਂਦੀ ਗੁਬਰ ਸੱਚੇ ਜੀ ਨਾ ਕਰੀ ਸੱਚੇ ਵੀ ਆ ਉਹਦਾ ਸੱਚ ਤੇ ਵੀ ਤਾਂਗਾ ਹੋਰ ਵਿੱਚ ਯਾਰ ਜਦ ਮਾਇਆ ਜਹੰਬੇ ਮੁਕਤਬ ਹੋਇਆ ਗਿਆ ਜਿਹੜਾ ਆਦਮੀ ਦੁਨੀਆ ਹੈ ਤੇ ਆਲਦੀ ਸੰਸਾਰੀ ਹੈ ਜੇ ਉਹ ਸੱਚਿਆਰ ਹੋਈ ਨਹੀਂ ਸਕਦਾ ਜੇ ਕਹਿੰਦਾ ਸੱਚਿਆਰ ਦਾ ਕੂੜੇ ਹੋਰ ਧੂੜ ਆਹੀ ਆ ਧੂੜ ਇਹਨਾਂ ਨੂੰ ਮੰਮ ਦਾ ਮਾਇਆ ਹੈ ਹਾਂ ਕਪੜੇ ਦੇ ਵਿੱਚ ਸੱਚਿਆਰ ਕੂੜਿਆ ਇਹ ਸੱਚ ਬੋਲਿਆ ਹੋਇਆ ਵੀ ਕਿ ਮੈਂ ਬਾਪ ਹੈ ਇਹ ਗੂੜਿਆ ਜਿਹੜੇ ਬਾਪ ਬਣਦੇ ਨੇ ਬਾਪ ਇਹ ਸੱਚੀ ਬਾਣੀ ਨਹੀਂ ਹੋ ਸਕਦੀ ਜੇ ਬਾਹਰ ਬਾਤ ਦੀ ਜ਼ਿੰਦਗੀ ਹੈ ਸੱਚ ਕੀ ਹੈ ਬਾਸੋਂ ਹੀ ਬਾਸੋਂ ਬਚਿਆ ਇਹ ਸੱਚ ਹੈ ਬਾਸੋਂ ਮਾਸ ਦਾ ਹੋਇਆ ਤਾਂ ਸੱਚ ਹੈ ਖੂਨ ਦਾ ਰਿਸ਼ਤਾ ਹੈ ਤਾਂ ਸੱਚ ਹੈ ਪਰ ਆਤਮਾ ਦਾ ਰਿਸ਼ਤਾ ਕੋਈ ਆਤਮਾ ਦਾ ਇਸ ਤਰ੍ਹਾਂ ਹੁਭਾ ਜਪ ਰਹਿ ਬਹੁਤ ਆਤਮਾ ਦੇ ਅਪਰੇਵੋ ਨਫਰਤ ਉਹ ਜੀਜਾ ਹੁੰਦੇ ਜੇ ਆਤਮਾ ਤੌਰ ਤੇ ਆਦਾ ਆਦਾ ਪ੍ਰੇਮ ਹੋ ਗਵਾ ਨਹੀਂ ਬਿਲਦੀ ਫਿਰ ਉਹ ਤੋੜੀਓ ਬਚਾ ਹੈ ਜਦ ਹੋਊਗਾ ਨਫਰਤ ਨਾ ਹੋ ਥੋੜੀ ਸਮੈਲ ਜਾਂ ਬੈਡ ਹੋ ਜਾਂਦੀ ਹੈ ਨਾ ਪਿੱਛੇ ਤਾਂ ਵੀ ਦਿਲ ਨਹੀਂ ਕਰਦਾ ਹਰੂ ਤੇ ਖਾਣ ਦੀ ਮਨ ਨਾਲ ਰਸੇ ਰਖ ਤਾਉ ਸਾਗੀ ਯਾਦ ਯਾਦ ਹਾਂ ਯਾ ਰਹਿਤ ਜੀ ਖਟਾਸ ਆ ਜਾ ਰੋ ਫਿਰ ਦਿਲ ਦੇ ਵਿੱਚ ਜਗਾ ਦੀ ਰੰਗੀ ਹੋ ਜੀ ਦਿਲ ਦੇ ਵਿੱਚ ਜਗਾ ਦੀ ਬ੍ਰੰਮੀ ਇਸ ਕਰਕੇ ਰਸਤੇ ਜੀ ਖਟਾਸ ਆਉਣ ਵਾਲੋ ਖਟਾਸ ਆਉਣ ਤੋਂ ਪਹਿਲਾਂ ਦੂਰ ਹੋ ਜਾਣਾ ਚਾਹੀਦਾ ਆ ਨਾ ਜਾਵੇ ਹਰ ਵਕਤੇ ਦੇਖੇ ਵੀ ਖਟਾਸ ਨਾ ਆ ਜਾਵੇ ਇਹ ਚੀਜ਼ਾਂ ਤੇ ਧਿਆਨ ਵਾਜਣਾ ਜੀ धीरे धीरे लेसद एत करके गुरु का ने जेने से दे विच खडा सोंदी आने दी दीती आप परे होगी सब बड़ा दरवाजा एना कुछ करके सरोवर के सब कुछ करके बिल्डिंग के उसी सब घर को बना के उन सारीयो संभालती तो घटास भी होनी चाहिए ਕੋਕੋ ਲੋਕਾਂ ਦਾ ਵੀ ਇਹ ਸਿੱਗੇ ਰੁੱਪ ਤੇ ਹੈਗਾ ਸੋਗਾ ਦਾ ਮਾਲਕ ਬੰਦਾ ਦਾ ਗਾਇਸ ਤੇ ਦੂਜੀ ਗੱਲ ਵਿਰੋਜ ਬੜੇ ਨੂੰ ਪਿੰਡਲ ਬਈ ਪੜੇ ਨੂੰ ਪੱਗ ਮਿਲਣੀ ਤੇ ਰੌਣਜੀ ਪੱਗ ਦੇਤੀ ਛੋਡੇ ਨੂੰ ਉਹ ਆਪਣੇ ਆਪਾਂ ਦੇਦੇ ਸੀ ਸਸਰੀ ਦਾ ਉਹ ਵੀ ਆਪਣੇ ਇਹੀ ਜਾਂਦਾ ਵੱਡੇ ਨੂੰ ਦਿੰਦੇ ਹਾਂ ਸੀ ਗੁਰਾਇਤ ਉਹਨਾਂ ਨੂੰ ਕੀ ਪਤਾ ਵੀ ਇਹ ਗੁਰਾਇਤ ਕੀ ਚੀਜ਼ ਹੈ ਉਹਨਾਂ ਦੇ ਬਾਪ ਨੂੰ ਪਤਾ ਲੱਗਦਾ ਸੀ ਗੁਰਦੇ ਖੇਤਾਂ ਆ ਜਾਂਦੇ ਲੋਕਾਂ ਨੂੰ ਉਹ ਵੀ ਜਾਣਨ ਕੀ ਬਮਾਰੀ ਹੈ ਲੋਦਾ ਆਪਣੇ حساب ਰਧੇਲ ਉਹ ਕਹਿੰਦੇ ਭਾਈ ਆ ਜਿਹੜੀ ਹੈ 14 ਸੰਸਾਰ ਦੀ ਇਹ ਤੁਸੀਂ ਸਾਜੂ ਲੈ ਲੋਰ ਪੱਗ ਮੈਂ ਛੱਡ ਕੇ ਲੈ ਜਾਂਦਾ ਇਹ ਤਾਂ ਛੱਡ ਕੇ ਆਉਂਦੇ ਰਹੇ ਨੇ ਜਾਇਦਾ ਪੱਗ ਸੰਸਾਰ ਉਹ ਕਹਿੰਦੇ ਇਹਦਾ ਹਿੱਸਾ ਹੈ ਅਸਤੀ ਪੰਗਰਾ ਬਾਪ ਦੇ ਬਾਦ ਬਾਗੇ ਜੂ ਕਮ ਵਲਾ ਸੀ ਚੌਰੀ ਇਹ ਕਮ ਵਲਾ ਤੱਕਰ ਕੇ ਉਹ ਕਹਿੰਦਾ ਸੀ ਘਰੇ ਛੱਡਿਆ ਉਹ ਦੁਨੀਆਂ ਦੁਨੀਆਂ ਦਾ ਇਹ ਕਹਿੰਦੇ ਕਿ ਉਹ ਬੁਰੇ ਹੋਰ ਤਰੀਕੇ ਦੇ ਇਹ ਆਉਂਦੇ ਮਮਦਾਨ ਆਇਆਲੀ ਪੰਗ ਦੇ ਸੀ ਉਹ ਨਾ ਉਹ ਦਾ ਸ੍ਰੀ ਗੱਤਿ ਉਹ ਹੀ ਨਾਲ ਲੱਗੇ ਸਾਧੂ ਆਦਿ ਇਹ ਤਾਂ ਸਮਝਾਣ ਨੂੰ ਵੀ त्याग ਗਿਆ ਇਹਦਾ ਵਿਆਹ ਹੀ ਪੁਰਾਣਾਂ ਆਂਦਰਾ ਬੜਾ ਲੱਗਦਾ ਸੀ ਜੀ ਤੇ ਚੰਦ ਬਾਹਰ ਜਤੀਏ ਜਤੀ ਵੀ ਬਹੁਤ ਬੜੀ ਜੱਸੀ ਜਿੱਕੇ ਇੱਡਾ ਬੜਾ ਫਰਾਉ ਨਾਨਕ ਦਾ ਖਰਾਬ ਬਣਾਇਆ ਸੀ ਅਜਾ ਠੀਕ ਤਰੀਕੇ ਨਾਲ ਨਹੀਂ ਸਿੱਖਣ ਦੇਖਿਆ ਇੱਕ ਬਾਹਰ ਜਤੀਬ ਦਾ ਪਹਿਲਾ ਕਰਤਾ ਕਿੰਨੀ ਬੜੀ ਸਕੀਮ ਉਹ ਨਾਮ ਤਾਂ ਹੀ ਕਰਾ ਜਮਕਾਰ ਨੂੰ ਗੜਚੜ ਆਇਆ ਜਮਦਾਰੂਪ ਨਹੀਂ ਤਾਂ ਸੀ ਲੋੜ ਨਹੀਂ ਰਹੀ ਐ ਸੁਧੂ ਬਸ ਤਾਂ ਮੈਂ ਉਹ ਉਹ ਤਾਂ ਨਾਮ ਤੇ ਹੀ ਖਤਮ ਹੋ ਗਿਆ ਜਦ ਇਹ ਗੱਲ ਚੱਲ ਚੜਿਆ ਉਹ ਪਈ ਉਹ ਉੱਥੇ ਬੈਠੇ ਰਹਿੰਦੇ ਇਹਨਾਂ ਜਲ ਬਾਅਦ ਜਿਹੜੇ ਖਤਿਆ ਦਾ ਰਾਜਨਾ ਬੋਲੋ ਬੇ ਖਤਿਆ ਦਾ ਜੇਰਾ ਪਈ ਹਤਿਆ ਦਾ ਸਾਡੇ ਕੋਲ ਕੋਈ ਰਾਜੇ ਤੋਂ ਰਹੇ ਨਹੀਂ ਡੋੜੇ ਨਹੀਂ ਉਹ ਹਤਿਆ ਦਾ ਜਰਰੋ ਸਾਡੇ ਬੁਰਖੀ ਫਿੱਕਾ ਸੋਧ ਜਿਹਾ ਚੱਕ ਚਾਲ ਰਵਈਆ ਗਾੜੇ ਗਲਾਂ ਨੂੰ ਤੋੜਨ ਆਰੇ ਮੇਰੇ بڑے ਕਿਲੇ ਤਾਂ ਉੜਦੇ ਪੁਰਾਣੇ ਬਣੇ ਹੋਏ ਹਜ਼ਾਰਾਂ ਸਾਲਾਂ ਦੇ ਕਿਲੇ ਗੜ ਤੋੜਦੇ ਦਰਬ ਦੇ بڑے ਹੋਏ ਬੱਤ ਦੀ ਗੱਲਾਂ ਨਾਲ ਚੱਕ ਚਾਰੇ ਚੱਕਾਂ ਦੇ ਜਿੱਤਨੇ ਰੋਸ ਤੇ ਚੱਕ ਚਾਲ ਹੋਈ ਜੋ ਤੇ ਨਾਂ ਦੇ ਵੱਲ ਇਸ਼ਾਰਾ ਕਰ ਲੈਣਾ ਸਪਾਰਸ਼ਾ ਤੇ ਸਾਹਿਬ ਜਣਾ ਆਪ ਲੜੂ ਨਾ ਫੋੜਾਉ ਲਾਉ ਤਾਂ ਕਿਹਾ ਨਾ ਨੇ ਦਸਮ ਹਾਂ ਮੈਂ ਨਹੀਂ ਕਿਹਾ ਪਤਾ ਨਹੀਂ ਪੜ ਕਿਹੜੀ ਪਬਲਿਕ ਤੇ ਜਗਜਾਰ ਹੋਈ ਪਹਿਲਾਂ ਬੱਤ ਦੀ ਜਗਜਾਰ ਹੋਈ ਆ ਕਿਹਾ ਹੋਇਆ ਕਾਲੇ ਗੜਾਂ ਨੂੰ ਤੋੜਨ ਨਾਲ ਸੁਬਤ ਵੀ ਕਚਾਰ ਲਈਆ ਕਹਿ ਕੇ ਫਿਰ ਉਹਨਾਂ ਨੇ ਆਪ ਲੜੂ ਮੈਂ ਫੌਜ ਲੜਾਉਂ ਕੇ ਆਪ ਲੜੂ ਮੈਂ ਫੌਜ ਲੜਾਉਂਗਾ ਉਹ ਖਾਸ ਬਾਹਰ ਆਈਏ ਤਾਂ ਆਖਰ ਚਾਈਆ ਜਦੋਂ ਮੈਂ ਕਦੀ ਅੱਛਾ ਵਾਹ ਉਹ ਜਪੇ ਜੇਨ ਲੜਨ ਉਹਦੇ ਬਾਅਦ ਹੈ 10 ਗ੍ਰਾਮ ਸੁਬੀਰ ਬਿਚੀ ਬਿਚੀ ਅਫੀਸ ਚ ਆਈਆਂ ਉਹਨਾਂ ਦੇ ਬਕਤੀਆਂ ਇਹ ਮਤਲਬ ਹੈ ਕਿਤਾ ਜਾਦੇ ਉਥੋਂ ਜਿਹੜੇ ਨਾ ਉਹ ਕਹਿੰਦੇ ਇਸ ਦਾ ਮੁਖਤੱਰ ਦੀ ਆਪਾਂ ਲੜਨਾ ਸਿਰਫ ਤੁਸੀਂ ਜਿਹੜੇ ਸਾਹਿਬ ਜਦਿਆਂ ਉਹਨਾਂ ਨੂੰ ਸਜ਼ਾ ਦੇ ਲਈ ਫਿਜ਼ੀਕਲ ਉਹ ਐਸ ਨੂੰ ਬੰਦਾ ਬਾਹਰ ਭੇਜਿਆ ਸੀ ਇਹ ਜੋ ਸੁੱਕ ਬੇਜੇ ਸੀ ਇਹਨੂੰ ਸਜ਼ਾ ਦੇ ਲਈ ਸਰਕਾਰ ਆਪਣਾ ਲੋੜ ਹੈ ਸਰਕਾਰ ਕਹਿੰਦੀ ਸਾਡੀ ਮੰਨੂ ਕਰੋ ਸਜਾਪਤ ਹੋਏ ਰੜਕੇ ਦੇ ਇਤਿਹੀਓ ਕਹ ਲੀਓ ਇੱਥੇ ਨਾ ਕਿਤੇ ਕਿਸੇ ਨੂੰ ਕਿਹਾ ਹੋਇਆ ਗੱਲ ਹੈ ਕਿ ਮੈਂ ਮੈਂ ਤੇ ਆਪ ਰੜੂਗਾ ਬਹੁਤ ਜਣੋਂ ਕਿਸੇ ਨਾ ਕਿਸੇ ਨਾਲ ਫਾਇਦਾ ਹਾਂ ਉਹਦਾ ਉਹੋ ਨਹੀਂ ਗੱਲਾਂ ਨੇ ਜੀ ਮਿਥਿਆ ਰਾਜ ਜੋਗਨ ਧਨਮਾਲ ਤੇ ਰਾਜ ਵਿਦੋਪਨ ਤਾਰੂ ਬਾਲ ਸਭ ਤੇ ਜਿਹੜੇ ਵਿੱਚ ਜਿਹੜੇ ਵਿੱਚ ਸੁਧਾਰ ਹੋਇਆ ਰਾਜ ਜੋਬਲ ਦਾ ਹਰ ਮਾਲ ਜਿਹਾ ਹੋਇਆ ਇਹ ਰਬ ਤੇ ਇਹ ਨਾਸਵੰਤਾ ਹੈ ਇਹ ਇਹ ਨਾਸਵੰਤਾ ਹੈ ਇਹੀ ਇਹ ਜਿਹੜਾ ਪੋਚ ਸੰਤਤ ਪੋਚ ਸੋਚ ਦਿੰਦੀ ਇਹ ਸੱਤ ਸਾਕਿਚ ਉੜਦਾ ਸਾਰਾ ਲਿਜੀ ਬਚਾ ਜਦੋਂ ਸੱਚ ਨੂੰ ਛੋੜਦਾ ਸਾਰਾ ਲੈਣਾ ਪੈ ਜੇ ਸੱਚ ਰਹੇ ਜੀ ਦੀ ਉਹ ਸੱਚ ਹੁੰਦਾ ਹੀ ਸੀ ਸੱਚ ਨੂੰ ਕਿਸੇ ਸਾਰੇ ਦੀ ਲੋੜ ਨਹੀਂ ਸੀ ਜਦਨੇ ਸੱਚ ਹੋਊ ਉਹ ਨੂੰ ਦੇ ਸਾਰੇ ਦੀ ਲੋੜ ਨਹੀਂ ਸੀ ਇਹ ਹੈ ਉਹ ਨਹੀਂ ਸੱਚ ਉਹ ਸੱਚ ਆਰ ਹੋਣਾ ਜਦੋਂ ਸੱਚ ਆਰਾ ਹੋ ਗਿਆ ਹੋ ਛੱਟ ਕੇ ਸੱਚ ਹੋ ਗਿਆ ਜਦੋਂ ਤੱਕ ਹੋ ਬਹੁਤ ਸੱਚ ਆਰੇ ਜਿੱਦਾਂ ਹੰਕਾਰ ਛੱਡ ਕੇ ਸੱਚਾਰਾ ਹੋਇਆ ਨਾ ਉਹ ਦਿਨ ਉਹਨੂੰ ਸਰੀਰ ਦੇ ਧਾਰੇ ਦੀ ਬਿਲਕੁਲ ਲੋੜ ਨਹੀਂ ਸਾਡੇ ਨੂੰ ਆਪਣਾ ਪ੍ਰਚਾਰ ਕਰਨ ਵਾਸਤੇ ਫੈਸਲੇ ਦੀ ਲੋੜ ਨਹੀਂ ਉਹਦੀ ਗੱਲ ਜੀ ਜਾਣ ਚਾਹੀਦੀ ਹੈ ਉਸ ਗੱਲ 'ਚ ਜੇ ਜੀ ਹੋਏ ਤਾਂ ਹੁਕਮ ਹੈ ਮੂੰਹ ਕਾ ਕਹਾ ਬੋ ਵਾਹ ਤਾਂ ਉਹ ਜੋ ਆਉਣਾ ਉਹਨੇ ਉਗੜੇ ਜਾਂਦੇ ਤੇ ਪੈਸਾ ਉਹਦੇ ਕੀ ਚੁਕਿਆ ਪੈਸਾ ਉੱਗੜ ਕੇ ਰੋਸ ਆਪਣੇ ਆ ਸਕਦਾ ਜੋ ਉਹਦੇ ਕਾਰੋਬਾਰ ਤੇ ਸਮਾਇਆ ਜੇ ਉਹ ਦ੍ਰਿਸ਼ ਉਹ ਸਰਗਰ ਦੇ ਜਮਾਇਆ ਦਾ ਪ੍ਰਭਾਵ ਹੋਊਗਾ ਕੱਲ ਦਾ ਅਸਰ ਤਕੂਰ ਜੇ ਉਹ ਤੱਕ ਨੈਚਰਲ ਹੋਊਗੀ ਪਹਾੜ ਆ ਉਹੀ ਹੋਊ ਛੱਤਾਂ ਦੇ ਥੱਲੇ ਉੱਥੇ ਅਸਰ ਜ਼ਿਆਦਾ ਹੋਊਗਾ ਇਸ ਕਰਕੇ ਰਿਜੀਮੂ ਨੂੰ ਜਾ ਕੇ ਜੰਗਰ ਦੇ ਬੈਕਟਰ ਜਲਾ ਤੇ ਖਲਦੇ ਸੀ ਬੈਕਟਰ ਲੈ ਰੱਖੇ ਸੀ ਲੋੜਾ ਵਧਾ ਕੇ ਤਿਆਰ ਘਟਾ ਕੇ ਸਾਡੀ ਗੱਲ ਦਾ ਸੱਚਾ ਦਾ ਫੋੜ ਤਾਂ ਕਿ ਗੱਲ ਦਾ ਸੱਚ ਪੜ ਲੇ ਗੱਲ ਦਾ ਜੀ ਜਿੰਨਾ ਪਰਪੰਚ ਵਧਾ ਲਊਗਾ ਆਦਮੀ ਉਹਨਾਂ ਉਹਦੀ ਗੱਲ ਦਾ ਸੱਚ ਘਟਣ ਲੱਗ ਕਿਆ ਆ ਗੱਲ ਬਦਲੂਗਾ ਕਿਸੇ ਵਜ੍ਹਾ ਨਾਲ ਕਾਲਜ ਬਦਲਾਉਂਦਾ ਹੋਊਗਾ ਕਾਲਜ ਬਦਲਾਉ ਕੱਢ ਪੈਂਦਾ ਜਦੋਂ ਉਹ ਨੂੰ ਇਹ ਹੋ ਜਵੇ ਤੇ ਮੇਰੇ ਫੌਜ ਤੇ ਗੈਂਦੀ ਵਧੀ ਚਾਹੀਦੀ ਫਿਰ ਉਹ ਕਾਲਜ ਫਰਕ ਪਾਉਣਾ ਹੂੰ ਜੇ ਉਹ ਕਾਲਜ ਫਰਕ ਪਾਉਣਾ ਕਰਾ ਜਾ ਤੇ ਫੌਜ ਹੋ ਗਈ ਜੋ ਉਹ ਗਏ ਜਿਆਦਾ ਨੇ ਸੰਸਾਰ ਦੇ ਵਿੱਚ ਉਹ ਤਾਂ ਬਹੁਤ ਸਟੇਟ ਦੇ ਕੂੜਿਆਲੇ ਨੇ ਆਵਾਜ਼ ਸੁਣ ਕੂੜਿਆਲੇ ਨੇ ਕੂੜਿਆਲੇ ਤਾਂ ਸਾਰੇ ਨੇ ਪਰੋ ਛੱਡਣਾ ਚਾਹੁੰਦਾ ਹੈ ਕਰਨਾ ਚਾਹੁੰਦਾ ਹੈ ਛੱਡ ਜੀ ਉਹਦਾ ਬੈਲੈਂਸ ਬੰਦ ਲੈਂਦੇ ਨੇ ਉਹ ਹੀ ਉਹ ਹੀ ਬੰਦ ਕਰਦੇ ਨੇ ਬਾਕੀ ਕਹਿੰਦੇ ਨੇ ਹੋਰਦੇ ਹੁੰਦੇ ਨੇ ਕੋਈ ਮੁਸ਼ਕਲ ਹੈ ਕਹਿੰਦਾ ਹੈ ਕਿ ਨਾ ਗੱਲ ਹੀ ਬਹੁਤ achhi ਹੈ ਨਾ ਮੁਸ਼ਕਲ ਹੈ ਥੋੜਾ ਬਹੁਤ ਆ ਬਸ ਤੇ ਨਹੀਂ ਬੰਦ ਹੈ ਨਹੀਂ ਬੰਦ ਤਾਂ ਅਗਲੇ ਬਾਾਰ ਅਗਲੀ ਬਾਾਰ ਉਹਨਾਂ ਸੰਚਾਰ ਜਨਬ ਲੱਗ ਜਾਂਦੇ ਗੁਰੂਆਂ ਵਲ ਦੇ ਲੋਕ ਲਈ ਜਨਮ ਹੋ ਗਏ ਬਹੁਤ ਨੇੜਿਆ ਬੀ ਸਤਸਾਹ ਲੋਕ ਚਾਤਾ ਕਰ ਮੋੜੇ ਮਨਪਤ ਇਹ ਉਹ ਲੋਕ ਹੈ ਸਤਿਕਾਰ ਇਹ ਨਹੀਂ ਹਾਰਿਆ ਹਾਂ ਬਾਕੀ ਜਿੱਤਦਾਰੇ ਉੱਪਰ ਬਾਕੀ ਧਰਮਾਂ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਆ ਰਹੇ ਨੇ ਐਵੇਂ ਆ ਰਹੇ ਸੋਕ ਸਕਦਾ ਹੈ ਜਨ ਕਿਉਂਕਿ ਆਦਮੀ ਵੱਡਦਿਆਂ ਦਾ ਸਾਰੇ ਤਨ ਬਣਾਉਂਦੇ ਨੇ ਚੱਗੇ ਬਣ ਕੇ ਸਾਰਿਆਂ ਤੇ ਆ ਜਾਂਦੇ ਪਛੰਬਿਆਂ ਨੇ ਇਕੱਠੇ ਹੋ ਜਾਂਦੇ ਜਦ ਚੰਗਿਆ ਦੀ ਤਾਂ ਦਾ ਜਿਆਦਾ ਹੋ ਜਾਏ ਸਾਰੇ ਤਰ ਬੁੱਝੋ ਔਰ ਇਕੱਠੇ ਹੋ ਜਾਂਣ ਔਰ ਫੇਰ ਸਮਝੋ ਉੱਤੇ ਪਲਟਾ ਜਾ ਦੋ। ਸਿਰ ਸਾਰ ਦੇ ਵਿੱਚ ਤੂੰ ਜਿਹੜੀ ਆਵਾਜ਼ ਹੈ ਉਹ ਘਟ ਜਾਂਦੀ ਹੈ। ਸ਼ੈਤਾਨੀ ਆਵਾਜ਼ ਕਮਜ਼ੋਰ ਪੈ ਜਾਂਦੀ। ਇਹ ਸ਼ੈਤਾਨੀ ਆਵਾਜ਼ ਤੁਮ ਲੋਕ ਨੂੰ ਹਾਂ ਇਹ ਤਾਂ ਗਾਜਾ ਲਾਉਂ ਪਰ ਉਹ ਕ੍ਰਿਸ਼ਨ ਨੂੰ ਕਹਿੰਦਾ ਪਰ ਇਹ ਜਿਹੜਾ ਅਰਜੁਨ ਹੈ ਕੋਈ ਤ ਉਹਨੂੰ ਮਾਰਦਾ ਪੂਰੇ ਮੇਰੇ ਜਿਹੜਾ ਹੈਗਾ ਉਹ ਉਹਦਾ ਵੱਡਾ ਭਰਾ ਇਹਨੂੰ ਕਾੜੂ ਮੈਂ ਤੇਰੀ ਮਰਦਾ ਸੁਣਵਾਰੇ ਉਹ ਕਹਾਂ ਮੇਰਾ ਭਗਤਾਂ ਨਾਲ ਜੁਆਸ ਹੈ ਕਹਿੰਦਾ ਤੂੰ ਤਾਂ ਖੰਖਣਾ ਵਾਲੇ ਨਾਲ ਨਾਲ ਨਾਲੇ ਦੀ ਗੱਲ ਨਾਲ ਚੱਕ ਵਾਕ ਵੀ ਚੱਕ ਚਾਲ ਸੰਖਨਾ ਆਦੇ ਤੇ ਦਾਦਾ ਜੀ ਸੰਖ ਬਜਦਾ ਤੇ ਛਾਤੀ ਪਾੜਦੇ ਹੱਥੇ ਉੱਤੇ ਆ ਗਾਇਆ ਜੀ ਜਿਹੜਾ ਮੈਂ ਗੱਲ ਨੂੰ ਸੁਣ ਰਹਾ ਲੜਾਈ ਦੀ ਹੋ ਰਹੀ ਲੜਾਈ ਹੋ ਰਹੀ ਆ ਹੋਰ ਤਾਂ ਨਹੀਂ ਲੜਾਈ ਆ ਉਹ ਇਹ ਕਹਾਵਾ ਮਾ ਸਾਥੀ ਮੈਂ ਬੋਲੂਗਾ ਤੇਨੂੰ ਮੈਂ ਤਾਂ ਦੱਸਦਾ ਮੈਂ ਬੋਲ ਨਹੀਂ ਸਕਦਾ ਤੇਨੂੰ ਬੁਲਾ ਸਕਦਾ ਮੈਂ ਨਹੀਂ ਬੋਲ ਸੰਤਾਨਾ ਨੀਂ ਗਰੇ ਸਾਧਰਾ ਤੇਰੇ ਜੀ ਤੂੰ ਕਹਦਾ ਵੇਰਾ ਜਲਾ ਸੰਖਰ ਇਹ ਤੇ ਤੇ ਨੀ ਕਪ ਕਰਦਾ ਮੇਰਾ ਹੀ ਨਾ ਚਰਚਾ ਜਿਹੜੀ ਉੱਥੇ ਹੋਈ ਹੋਈ ਆ ਉਹ ਦੇਰ ਦੀ ਸੁਣੀ ਆ ਪ੍ਰਾਣੀ ਤੇਰੀ ਵੇਹ ਦੇ ਤਾਂ ਫਿਰ ਕੋਈ ਗੱਲ ਹੈ ਗੁੱਡੂ ਕੀ ਗੱਲ ਹੈ ਸੰਖਰਾ ਦਾ ਛੱਤੀ ਕੋ ਪੜਦੂ ਫਤਵਾ ਦਾ ਸਾਥੀ ਪਰਦੋ ਗਏ ਇਹ ਗੱਲਾਂ ਅਤਰਾਧਾਨੀਆਂ ਕਿਹਾ ਕੋਈ ਹੁਜਜ ਕੋਈ ਚਾਹ ਵਿੱਚ ਕੋਈ ਸਬਦ ਹੈ ਉਹਦੇ ਅਸੀਂ ਉਹ ਜਿਹਾ ਸਦਾ ਦੀ ਗੱਲ ਰੰਦੇ ਆ ਉਹ ਹੀ ਗੱਲ ਸਾਡੇ ਕਿ 2000 ਰੁਪਏ ਆ ਰਹੀ ਹੈ ਕੋਈ ਪੱਤੀ ਉਹ ਦੂਗੀ ਕਰਦੀ ਹੁੰਦੀ ਆਪਣੇ ਦੂਦੂ ਉਹਦੀ ਗੱਲ ਹੈ ਚਾਹ ਹਾਂਜੀ ਮਿੱਥਿਆ ਰਾਜ ਜੋਬਨ ਧਨਮਾਲ ਰਾਜ ਜੋਬਨ ਧਨਮਾਲ ਅਰਾਜ ਜੋਬਨ ਧਨਮਾਲ ਇਹ ਜਿਹੜੇ ਇਹਦੇ ਖੱਤਰ ਵਿਸ਼ਨੂੰ ਆ ਗਿਆ ਦੇਚ ਰਾਜਾ ਗਾ ਰਾਜ ਜੋਬਨ ਧਨਮਾਲ hath ਕਰਕੇ ਵਿਸ਼ਨੂੰ ਸਰਪ ਇੱਕ ਅੜਕਾ ਬਣ ਗਿਆ ਆਪ ਧਰਮ ਦੇ ਵਿੱਚ ਸਮਾ ਰੋਕ ਕੇ ਵਰਜਾ ਬਾਇਆ ਹੋਲ ਤਾਂ ਵਿਸ਼ਨੂੰ ਦੀ ਜਾ ਜਉਦਾ ਤੇ ਕੋਈ ਮੁਕਤੀ ਹੋ ਜਵੇ ਆਪਣੀ ਨਾ ਮੁਕਤੀ ਚਾਹਦਾ ਹੈ ਸੂਰਜ ਜੋ ਜੋ ਬੰਦ ਅਨੰਦ ਫੜਿਆ ਹੋਇਆ ਆ ਜੀ ਉਸ ਤੇਰੀ ਦੁਨੋਂ ਮੁਕਤੀ ਦਾ ਤਿਆਗ ਰਾਜ ਉਹ ਤਰਨੰਦੀ ਜਾਗੋ ਜਿਹੜੀ ਮੁਕਤੀ ਬਿਲਿ ਹੈ ਉਹਦਾ ਬੰਨੇ ਸੀ ਉਹਦੇ ਸੇਬ ਦੇ ਸੋਹ ਫਰੰਸਿਸ ਤੋਂ ਬੰਦਾ ਭਜਿਆ ਕਹਿੰਦੇ ਹਾਂ ਕਿ ਮੁਕਤੀ ਨਹੀਂ ਜਾਈਂਦੀ ਸਰ ਆਲੇ ਕੋਈ ਨਹੀਂ ਆਲੇ ਠਹਿਰੋ ਫੇਰ ਸੱਚ ਦੇ ਲੈ ਲਓ ਜਿਆਦਾ ਗੱਲ ਕਰੋ ਮੈਂ ਤਾਂ ਹਿਬਰਤੀ ਹੈ ਸਹੀ ਵਿਚਿਆ ਰੂਪ ਹੈ ਜਿਹੜਾ ਤਾਂ ਚੰਤ ਰੂਪ ਆ ਕੋਈ ਵਿਚਿਆ ਉਹ ਰੂਪ ਨੇ 2000 बुद्धिमान धर्म ਦੇ ਵਿਰੋਧ। ਧਰਮ ਦੇ ਵਿਰੋਧ। ਔਰ ਧਰਮ ਗਾਦੀਵਾਰੇ ਸਾਹਿਬ। ਬੜੇ ਬੜੇ ਤੇ ਚੂਮਾਰੇ ਦਰਸੋਂ ਚਾਲਦੇ ਨੇ। ਾਰੇ ਕਾਉਂਟਰ ਤੇ ਚੂ। ਚੋਰ ਧਰਮ ਵਿਰੋਧੇ ਵਾਲੇ। ਸਿਰੋਈ ਸਜ਼ਾ ਕੀ ਮਿਲੀ। 1000 ਸਾਲ ਗੁਲਾਮ ਰਹੇ ਮੁਸਲਮਾਨ। ਉਹ ਤੇ ਰਹਿੰਦੀ ਪਹਾੜ ਵੀ ਝੜ ਗਏ ਉਹ ਪਹਾੜ ਹੋ ਗਏ ਨਹੀਂ ਉਹ ਜਪਾਂ ਤੋਂ ਚੱਬਦੇ ਨਾ ਚੱਬਦੇ ਕੋਰਾ ਨਹੀਂ ਪਤਾ ਆਜੇ ਇਹਨੂੰ ਵੀ ਪਤਾ ਆਜੇ ਜੇ ਤੁਸੀਂ ਕੱਲ ਮੈਂ ਦੀ ਗੱਲ ਸਾਰੇ ਤਿਆਰ ਨਹੀਂ ਤਾਂ ਪਤਾ ਤੇ ਕਿਹਦੇ ਜਾਣਦੇ ਉਹ ਜੌਂਦਰ ਨੇ ਵੀ ਸਾਹ ਨੂੰ ਅੱਜੇ ਸੱਤ ਗੋਡੀ ਬੁਲਾ ਲੈ ਚైనా ਬੁਲਾਇਆ ਨਹੀਂ ਸਮਝ ਤੁਰੇ ਉਹ ਗੋਡੀਆ ਚైనా ਜਿਹੜੇ ਚੈ ਦੀ ਪੁੱਛੇ ਲਾਵੇ ਕਹਿੰਦੇ ਨੂੰ ਬਰਦਾਸ਼ਤ ਕਰਨਾ ਉਹਨਾਂ ਨੇ ਕਹਿੰਦੇ ਆ ਕੇ ਮੁਕਤੇ ਵਿੱਚ ਉਹ ਉੱਥੇ ਪਰੇ ਚੈ ਨਾਲੇ ਪ੍ਰੋਬਲਮ ਹਾਂ ਜਿੱਥੇ ਅਗੇ ਹੋ ਆਹ ਹੋ ਜੀ ਉਹਨਾਂ ਦੇ ਆ ਗਏ ਬੜਾ ਜੀ ਉਹ ਹੋ ਜੀ ਆ ਗਏ ਨਾ ਵੀ ਤੇ ਕੰਦੇ ਕਰੂੰਗਾ ਸੇਖ ਹੌਂਦਾ ਉਹਨਾਂ ਤੇ ਇਹਨਾਂ ਮਾਂ ਦੀ ਗੱਲ ਨੂੰ ਅਮਰੀਕਾ ਵੀ ਅਮਰੀਕਾ ਨੂੰ ਵੀ ਲੋੜ ਹੈ ਨਾ ਵੀ ਅਮਰੀਕਾ ਡਰਿਆ ਪਿਆ ਕੁਝ ਤੇ ਹੇ ਸਾਰੇ ਮੁਸਲਮਾਨਾਂ ਤੇ ਹੀ ਸਾਰੇ ਮੁਸਲਮਾਨ ਤੋਂ ਹੀ ਵੰਨੇ ਇਸਾਈਆਂ ਦੇ ਇਸਾਈ ਸਾਰੇ ਗਰੇ ਪਏ। ਤੁਹਾਡੇ ਅਮਰੀਕਾ। ਹਮੇਸ਼ਾ ਇਹ ਲਾਭ ਦੇ ਉਹ ਤਾਂ ਕਹਿੰਦੇ ਕੋਈ ਨਾ ਕੋਈ ਸਾਡੇ ਬੂਦੇ ਲੱਗਦੇ। ਬੋਲ। ਕਾ ਮੁਸਲਮਾਨ ਇਕੱਲਾ ਹੀ ਉਹ ਜਿਹਾ ਨਾ ਬਣਾ ਕੇ ਰੱਖਦੇ। ਠੀਕ ਹੈ। ਸਾਰੇ ਹੀ ਨਹੀਂ। ਇਹ ਗੱਲ ਇਹ ਜਿਹੜਾ ਧਾਰਮਿਕ ਜਿਹੜਾ ਧਾਰਮਿਕ ਲੈ ਕੇ ਆਏ ਹੋਏ ਬੱਚੇ ਨੇ ਉਹ ਪਰ ਜੇ ਚਲੋ ਤੇ ਬੱਚੋਂ ਭਾਵਿੰਦ ਤੇ ਮਾਰੇ ਤਾਂ ਹੀ ਹੁਣ ਉਹ ਨੇ ਬਠੇ ਕੋਏ ਤੇ ਨਾ ਆਪਾ ਜੇ ਹੈ ਜੇ ਨਾ ਰਾਇਓ ਕਦੇ ਮਾਰੇ ਲੋ ਜੇ ਨਹੀਂ ਆਣੋ ਜੇ ਨਾ ਤੇ ਕਾਨੂੰਨ ਸੀ ਆਪ ਆਵਰਾਜੇ ਬਣਦੇ ਤੇ ਇਹ ਉਹ ਹੈ ਜਿਹੜਾ ਇਹਨਾਂ ਕੋਲ ਪਹੁੰਚਾ ਦੇ ਪਾਈਏ ਸਾਡੇ ਕੋਲ ਪਹੁੰਚਾ ਜੰਤਾਲੇ ਗੋਦੀ ਨੰਦ ਤਾਜੀ ਬੀਤੀ ਹੈ ਖਜਰ ਪਈਆਂ ਤੋਂ ਤੁਹਾਡੇ ਨੂੰ ਹੀੜੇ ਜਵਾਹਰ ਕੀ ਲੋ ਉਹਨਾਂ ਕੋਦੇ ਮੁਖੀ ਵਰਤੀ ਹੋਵੇ ਕਿਥੇ ਰਹੇ ਜਾ ਉਹਨਾਂ ਨੇ ਜਿੱਤ ਰਕੀ ਕੀਆ ਤੋਂ ਸਾਰੇ ਚਿੱਦਾ ਮਾਲ ਵੜੇ ਸਤੇ ਜੁਦੀ ਨੂੰ ਹੋਸ਼ ਲਿਆ ਸੀ ਇਹਨਾਂ ਗਲੇ ਬੱਧ ਪੱਦਨ ਮਰਦੇ ਸਾਰੇ ਥੋੜੀ ਕਿ ਪਤਾ ਦੇ ਲਾਉਣ ਲੈਂਦੇ ਫਰਮੀ ਮੰਦਰ ਕੋਰਦਵਾਰੇ ਪੈਸਿਆਂ ਨਾਲ ਭਰੇ ਰਹੇ ਨੇ ਭਰੇ ਭਰੇ ਸ਼ਬਦ ਤਾਂ ਕੁਝ ਹੋ ਸਕਦਾ ਹੁਣ ਇਹ ਆਗੇ ਮੋਦੀ ਉਹ ਇਹ ਮੰਨ ਲੈਣ ਸਾਰੇ ਪੈਸੇ ਜਿੰਨੇ ਨੇ ਉਦਵਾਂ ਚ ਉਖਾੜਾ ਨਹੀਂ ਗਿਆ ਪਬਲਿਕ ਦਾ ਹੀ ਆ ਯਾਰ ਇਹ ਇਹਨਾਂ ਦੇ ਸਾਨੂੰ ਗਾਣਾ ਹੀ ਉਹ ਮੈਂ ਕਹਿੰਦਾ ਪਰਮੇਸ਼ਰ ਦਾ ਰੱਬ ਦਾ ਪਬਲਿਕ ਤੇ ਲਾਓ ਫਿਰ ਯਾਰ ਅਬ ਲਾਓ ਕਿਥੇ ਉਹ ਕਹਿਣਾ ਲਾਓ ਫਿਰ ਨਾਲ ਆਇਓ ਥੋੜਾ ਉਹਨੂੰ ਲਓ ਸਰਕਾਰ ਹੈ ਭਈ ਮਾਲਕਾ ਜੀ ਭਲ ਕਹੇ ਵੀ ਨਾਲ ਲਾਓ ਥੋੜੇ ਨੂੰ ਜਿਹਾ ਸੀ ਬਸ ਥੋੜਾ ਹੈਗਾ ਯਾਰ ਗੁੱਟਿਓ ਗੱਲ ਲੈ ਬੋੜੀ ਬਦੂਕ ਬਣਾ ਲਓ ਠੀਕ ਹੈ ਇਹ ਰੱਬਾ ਨੂੰ ਲੈ ਆਓ ਉਹ ਕਹਿਦੇ ਆ ਗਏ ਕਿਆ ਤੁਸੀਂ ਨਾ ਸਭੀ ਰੱਬ ਦੀ ਪਬਲਿਕ ਖਾਏਗੇ ਨਹੀਂ ਤੁਹਾਡੇ ਕੋਲ ਦਾ ਪੈਸਾ ਹੈ ਨਹੀਂ ਰੱਬ ਦਾ ਪੈਸਾ ਨਹੀਂ ਹੈ ਰੱਬ ਦੀ ਪਬਲਿਕ ਹੈ ਪਰ ਥੋੜੇ ਜਿਹਾ ਲਈਏ ਤੇ ਕਿਉਂ ਬਲਾਈਏ ਥੋੜੀ ਜਿਹੀ ਟੱਲੇ ਪਬਲਿਕ ਨਹੀਂ ਕਰਨੇ ਚਲੇ ਜੋ ਉਹਦਾ ਲਿਖਿਆ ਹੈ ਉਹਦਾ ਬਿਤਾਉੂ ਚੱਲਣਗੇ ਬਸ ਕਿਰਪਾ ਦਾ ਬਲਾਈ ਚੱਲੂਗਾ ਰੱਬ ਦੀ ਮਰਜ਼ੀ ਇਨਸਾਨ ਕੰਮ ਕਰੂ ਚੱਲ बस ओ ये कह दुवा के सादु ये सब गलत ਕਰਦੇ ਹੂ ਉਹ ਜੀ ਤੁਜੀ ਇਹਨਾਂ ਦਿੱਤਾ ਆਪਣੇ ਘਰ ਨੂੰ ਬੁਦਰਾ ਦੇ ਖਰਾ ਆਪਣੇ ਲੋਕਾਂ ਦੇ ਆ ਪਾਸਾ ਨੇ ਰਾਜਾਂ ਦੇ ਹੁੰਦੇ ਹੀ ਨੇ ਰਾਤ ਹਾਥੀ ਕੋੜ ਬਸ ਵਧੀਆ ਇਹਦਾ ਬਿਥਾਰੇ ਦੀ ਜਾਣ ਰਹਿਣੀਆਂ ਥੋੜਾ ਜਲ ਵਾਸਤੇ ਨੇ ਆ ਜੀਵਨ ਰਹਿਣਾ ਨੇ ਜਨਨ ਇਹੇ ਦਾ ਜਨਮ ਢਾਂ ਗਿਆ ਆ ਜੀਵਨ ਵੀ ਕਰਨਾ ਮੌਕਾ ਚਲਾਇਆ ਇਹਦਰ ਚਾੜ ਬਕੌੜੀ ਖਾਈ ਜਾਣਾ ਉਹ ਕੰਠਾ ਰਹੇਗਾ ਫੇਰ ਕਿਤੇ ਫਪੜਨੇ ਹੋ ਜਾਣੀ ਹੈ ਹੋਲਾਈ ਲੱਗੀ ਹੋਈ ਹੈ ਵਦੇ ਦੀ ਤੋਂ ਆਪਣੀ ਘੜੀ ਦਾ ਜਾੜ ਦੋ ਤੁਹਾਡੇ ਲਾਈਨ ਤੇ ਗੱਡੀ ਆਉਣੀ ਤੇ ਜਨਰਲ ਗੱਡੀ ਆਊਗੀ ਸਟੇਸ਼ਨ ਤੇ ਖਾਦੀ ਜੇ ਕੋਈ ਤੈਨੂੰ ਆਉਂਦੇ ਹੋ ਜੀ ਗੱਡੀ ਗੱਡੀ ਨਾ ਪਸੋ ਨਿੱਥਿਆ ਰਾਸਵ ਹਸਤੀ ਅਸ ਰਾਸੋ ਵਸਰਾ ਆਹ ਵਸਰਾ ਕੱਪੜੇ ਬੋਲਦੇ ਆਂ ਹਾਂ ਆਈ ਕੁਡ ਨਾ ਵਰਤੀਆ ਨਿੱਥਿਆ ਰੰਗ ਸੰਗ ਮਾਇਆ ਦੇਖ ਆਹ ਇੱਥੇ ਦਾ ਰਿਖੇ ਵਾਲਾ ਮਾਨ ਨਹੀਂ ਉਹ ਘੜਾ ਹਰਦਾ ਮੇਰਾ ਘਰ ਉਹ ਨਾਲ ਦੇਖਦਾ ਆਪਣੇ ਜੂਨਾ ਜਿਹੜਾ ਦਾ ਆਪਣਾ ਤੇ ਅਰਦਾਸ ਤਾਂ ਬੜੀ ਗੱਲ ਆ ਮਿੱਥਿਆ ਰੰਗ ਸੰਗ ਮਾਇਆ ਤੇ ਹਾਸਾ ਹਾਂ ਜਿਦਿਆ ਰੰਗ ਸੰਗ ਸੰਗ ਮਾਇਆ ਦੇ ਸੰਗ ਜਿਹੜੇ ਲੱਗ ਰਹੇ ਸਰੀਰ ਦੇ ਸੰਗ ਤੇ ਪਿੱਛੇ ਤੇ ਰੰਗ ਦੇ ਚਿਰ ਮਾਇਆ ਦਾ ਸਾਡਾ ਅੱਦੇ ਕੈਸੇ ਜਨਾਏ ਵੀ ਮਿੱਥਿਆ ਮਾਇਆ ਥੋੜਾ ਜਿਹਾ ਹੈ ਹਾਂ ਜਿਵੇਂ ਥੀਏਟਰ ਉਹ ਸਤਿ ਸ੍ਰੀ ਅਕਾਲ ਜੇ ਕੱਲ ਦਾ ਹੋ ਜਾਵੇ ਸਤਿ ਸ੍ਰੀ ਅਕਾਲ ਉਹ ਬਹੁਤ ਸਤਸਰ ਹੋ ਜਾਣਾ ਉਸ ਆਪਣੇ ਉਪਰ ਗੁਮਾਨ ਤੇ ਨਹੀਂ ਵਾਹ ਬਣ ਕੇ ਰਹਿ ਜਾ ਗੱਡ ਕੇ ਆ ਗਰੂ ਮੈਂ ਆਉਂਗੂ ਇਹਦਾ ਬੁਮਾਨ ਕਰ ਦਾਨਾ ਤੇਰੀ ਜਿਹੜੀ ਕਿਉਂ ਚੋੜਾ ਕੁਛ ਦਿਨਾਂ ਬਾਅਦ ਆਪੇ ਬਾਜੀ ਉਹ ਕਹਿੰਦਾ ਬਾਪ ਪੜਾਇਆ ਚਾਹੇ ਕੈ ਚਲੋ ਚਾਹੇ ਬਾਠ ਕੁਝ ਜਦੋਂ ਬਗਾਨੀ ਦਾ ਰੜੀ ਚੱਕ ਕੇ ਨਾ ਮੈਂ ਤੇਰੀ ਮੇਰੇ ਜੂ ਸਾਰੀ ਦੀ ਮਾਇਆ ਚੱਕ ਰੂ ਪੜੀ ਨੂੰ ਖਾ ਲਿਆ ਤੇਖੋ ਜੀ ਥੋੜੀ ਬਾਅਦ ਵਿੱਚ ਵੜ ਕੇ ਲੈ ਜੂ ਇਹਦਾ ਕੁਝ ਕਹਿੰਦੇ ਸੀ ਪਹਿਲਾਂ ਕੀ ਵੇ ਨਹੀਂ ਗੱਲੇ ਕੱਲ੍ਹ ਦੀ ਗੱਲ ਨਹੀਂ ਕੱਲ੍ਹ ਦੀ ਉਹ ਕੁਮੀਰ ਉਹਨਾਂ ਨਾਲ ਕੰਨਾ ਕਰਨਾ ਪਾ ਹਾਰ ਪਰਾਇਆ ਚਾਹੇ ਪਰਾਇਆ ਉਹ ਚਲੇ ਜਾਓ ਬਾਟ ਫੇਰ ਵੀ ਇਹ ਤੱਕਦੇ ਰਹਿ ਕੇ ਚੱਲਣਾ ਚਾਹੁੰਦਾ ਅਸਰ ਜਿੱਤ ਕਲਾ ਹੋਵੇ ਤਾਂ ਹੈ ਕਹੇ ਕਿਉਂ ਉਹ ਕਹਿੰਦਾ ਆਪਣਾ ਆਪਣੇ ਪਾਰੇ ਜਿਹੜਾ ਇਹਦੇ ਤੇ ਬੋਝ ਉਤਨੀ ਨਹੀਂ ਲੱਗਦਾ ਉਦੋਂ ਦੀ ਦਸਦਾਤ ਹੋਿਆਂ ਦਾ ਨਹੀਂ ਕੀ ਘਾਟੀ ਪਤਾ ਕਹੇ ਜੀ ਆਪਾਂ ਲੈ ਕੇ ਚੱਲ ਹੁਣ ਉਥੇ ਐੇ ਜੀ ਘਾਟੀ ਐ ਦੂਰੇ ਝੱਕਲੇ ਹੋਣ ਆਪਾਂ ਹੀ ਲੈ ਆਪਾਂ ਹੀ ਕਹੇਗਾ ਬਾਹ ਦੇ ਧੋਲ ਦੇ ਬਾ ਤਸਲ ਬੋਲ ਜਾਨ ਬੋਲ ਤਾਂ ਸਭ ਨਹੀਂ ਜਾਂਦਾ ਸੱਕ ਗਿਆ ਦੱਤਾਂ ਤੇ ਬਗਾਨਾ ਤਾਂ ਨਹੀਂ ਹੋਦਾ ਨਾ ਬੰਦਾ ਬਾਲਾ ਬੜਾ ਹੁੰਦੀ ਹੈ ਹੱਥ ਬਾਹਣੀ ਜੇ ਉੱਠੀ ਜਿਹੜੀ ਪਸਤੀ ਹੈ ਦੁਨੀਆ ਪਾ ਮੈਂ ਤਾਂ ਸਹਿਰੇ ਪਰ ਫਿਰਦੀ ਜਾ ਰਹੀ ਅਸਰ ਅਸਰ ਕਰਦੇ ਪਾਰੋਂ ਨੇ ਕਿਹਾ ਆਇਆ ਅੰਦਰੋਂ ਲੈ ਜਾ ਮੁਰਤਕ ਨੂੰ ਉਹ ਉਹ ਪਾਰੋਂ ਨੇ ਕਿਹਾ ਮੰਨ ਭਾਇਆ ਚੋਂ ਆ ਜੀ ਪਤਾ ਨੂੰ ਉਹਨੇ ਦੇ ਦਰਵਾਜ਼ੇ ਅੰਦਰੋਂ ਨੀਂਹ ਜੋਟੇ ਗਿਆ ਉਹ ਸਭ ਕੁਝ ਨਹੀਂ ਸੁਣਿਆ ਹੋਇਆ ਜੇ ਅਜੇ ਇੱਕ ਬੁੱਧੀ ਹਲਕਾਣ ਨੇ ਚਾਤਰ ਫਿਰ ਅਸਰ ਰੋਗਾ ਫਿਰ ਕਬਿਰ ਅਸਰ ਅੱਲਾ ਅਬਰ ਕੀ ਰੋਕ ਕਿ ਸਭ ਤੋਂ ਅਲਗੂਗਾ ਸਭੇ ਸਾਥ ਵੀ ਕਰਨੀ ਪਈ ਹੈ ਸਾਰੇ ਭਗਤੀ ਹੈ ਆਇਓ ਸਾਰੇ ਆ ਮਹਾਂ ਦਾ ਕੇ ਬੈ ਦਨਗਾ ਨੂੰ ਜਾ ਫਿਰ ਦਿਨ ਬੜੀਆ ਤੇਰੇ ਕੰਮ ਉਹ ਵਿਭਕਤੀ ਦੀ ਫਿਰ ਦੇ ਜਵਾਬ ਹਟੇ ਪੂਰੀ ਹੋਈ ਹੋਈ ਰਸਾਇਣੇ ਆਪਾਰਾ ਫੜਾਇਆ ਤਾਂ ਇਸੇ ਭਗਤੀ ਸਾਧਕੀ ਸਾਧਨ ਜਦ ਜਿਵੇਂ ਹਰ ਕੇ ਚੱਲ ਆਜੇ ਘਰ ਚੱਲ ਰਹੇ ਨੋਰ ਤਾਂ ਜਾ ਰਹੇ ਜਾ ਕੇ ਫੈਰੀ ਥੱਕਾਂ ਤੇਰ ਜਮਨ ਜੇ ਨੂੰ ਕੋਈ ਮਿਲਦਾ ਪੈਰ ਤਾਂ ਹੁਣ ਚੱਲ ਨਹੀਂ ਸਕਦਾ ਲੋਏ ਉਹ ਦੂਰ ਕੱਢੇ ਹੋਗੇ ਟਿਕ ਹੋ ਗਿਆ ਪੈਰ ਤਾਂ ਪੈਰ ਤਾਂ ਰਹਿਣਾ ਥੱਲੇ ਬੰਲੀ ਜਗਾਂ ਸਤਾਂਮ ਥੱਲੇ ਆਇਓ ਤਾਂ ਫਿਰ ਤੁਮ ਤਮੇ ਇੱਕ ਪੈਰ ਲਾ ਤੋਂ ਨਹੀਂ ਪਾਉਤਾ ਅਜੱਜ ਆ ਕਹਿ ਰਿਹਾ ਹੋ ਪਾਇਆ ਤਾਂ ਧਰਤ ਦੇ ਹੁਣ ਤੋੜ ਨਹੀਂ ਸਕਦਾ ਤਾਂ ਸੱਜਣਾ ਹੈ ਸਰਪਾ ਨੇ ਲੋੜਪੋੜ ਹੋਵੇਗਾ ਯਾਨੀ ਅਸਰ ਹੋਇਆ ਰੁਕੀ ਜੀ ਅਸਰ ਹੋਇਆ ਉਹ ਅਸਰ ਦਾ ਹੀ ਫੱਲਣਾ ਪਾਣੀ ਉਹ ਵੀ ਅਸਰਿਆ ਜੇ ਅਜੇ ਪਹਿਲਾਂ ਰਹਿਦਾ ਕੁਝ ਤਾਂ ਹਾਂਜੀ ਅਸ਼ਾਂਤੀ ਹੈ ਜੀ ਸਿਰ ਭਗਤੀ ਸਾਰ ਕੀ ਇਹਨਾਂ ਸਾਧ ਕੀ ਚਾਲ ਸਾਧ ਕੀ ਸਾਧ ਸਾਧ ਕੀ ਸਾਧ ਦੀ ਗੱਲ ਕੀਤੀ ਹੋਈ ਹੈ ਐਥੇ ਜੋ ਅਸਰਪਰਕ ਕੀਤਾ ਗਿਆ ਸਿੱਧੂ ਰਿਹਾ ਜੋ ਹਾਂਮ ਰਹਿਦਾ ਹੈ ਯਾਨੀ ਉਹ ਤੋ ਹੈ ਉਹ ਪਹਿਲਾਂ ਰਹੀ ਨੇ ਉਹ ਨਾਲ ਜਪ ਤੋਂ ਸਵਾਲ ਕਰ ਲਿਆ ਭਗਤੀ ਅਸਰ ਕਾਤੇ ਅਰੇ ਸਾਧ ਕੀ ਸਾਧ ਜੀ ਅਜੇ ਫਸੀ ਜਰ ਹੈ ਕੋਈ ਨਹੀਂ ਪੂਰੀ ਹੋਈ ਨਹੀਂ ਚੱਕਰ ਆ ਜੂਗਾ ਉੱਪਰ ਹੁੰਦਾ ਵਿਚਾਰਨ ਦਰਕਾਰ ਨਹੀਂ ਨਾਨਕ ਜਪ ਜਪ ਜੀਵੈ ਹਰ ਕੇ ਜਪ ਨਾਨਕ ਜਪ ਜਿਹੜੇ ਨੇ ਅਜਿਹਾ ਜਪੜੇ ਨੇ ਉਹ ਬੋਲਦੇ ਜਿਹੜੇ ਨਾ ਬੋਲ ਹਾਰੇ ਗਲੇ ਚ ਗੁਨਾ ਦਾ ਥੁਣ ਵਾਲਾ ਫੇਰਦੀ ਇੱਥੇ ਉਹਨਾਂ ਦੀ ਉਹਨਾਂ ਦੀ ਮਾੜਾ ਫੇਰਦੀ ਹੈ ਜੰਗਰੂ ਵੀ ਹਰ ਕੇ ਚਾਰ ਦਿੱਤੀ ਹਾਂ ਹਰ ਫਿਰ ਜਾ ਚੱਲਣਾ ਉੱਥੇ ਤੋਂ ਲਾ ਹੈ ਫੱਟੀ ਵਾਲਾ ਬਹੁਤ ਭਾਈ ਫਿਰ ਕਦੇ ਪੁੱਠੇ ਕਦੇ ਸਿੱਧੇ ਉਹ ਹੀ ਵਾਲਾ ਫੇਰਦੀ ਹੈ ਜਾਂ ਰੜਕਣਾ ਮਾੜੇ ਫੇਰਦੀ ਹੈ ਕਦੇ ਇਹ ਰੁਕਲੇ ਰੁਕਲੇ ਕਦੇ ਪੁੱਠੀ ਕਰਦੇ ਕੇ ਫਿਰ ਸਮਝੀ ਜਾਂਦੇ ਸੀ ਸ਼ਬਦ ਵਿਚਾਰ ਸ਼ਬਦ ਵਿਚਾਰ ਸ਼ਬਦ ਚਾਹ ਮਾਲਾ ਹੀ ਹੈ ਕਦੇ ਐਂਕੋ ਮੁਗਦੀ ਕੁਦਾ ਦੀ ਕਦੇ ਐਂਕੋ ਮੁਗਦੀ ਮਾਲਾ ਹੀ ਹੈ ਉੱਥੇ ਉਹ ਜੇ ਗੱਡੀ ਕਰਦੇ ਐਂ ਚਲੇ ਗਏ ਗੱਡੀ ਆ ਗਿਆ ਹੈਗਾ ਕਿ ਉੱਥੇ